ਬੱਬੇ ਬਾਜੀ ਖੇਲਣ ਲੱਗਾ ਚੌਪੜ ਕੀਤੇ ਚਾਲ ਜੁਗਾ ਜੀ ਜੰਤ ਸਭ ਸਾੜੀ ਕੀਤੇ ਪਾਸਾ ਢਾਲਣਾ ਆਪ ਲੱਗਾ ਜਿਹੜੇ ਚੌਪੜ ਦੇ ਵਿੱਚੋਂ ਪਿਆਦੇ ਹੁੰਦੇ ਨੇ ਦਰਦਾ ਹੁੰਦੀਆਂ ਨੇ ਗੋਟੀਆਂ ਜਿਹਨੂੰ ਕਹਿੰਦੇ ਨੇ ਇਹ ਜਿਹੜੇ ਜੀ ਜੰਤ ਦੇਖੋ ਜੀ ਜੰਤ ਨਾਲ ਜੀ ਵੀ ਹੈ ਜੰਤ ਵੀ ਹੈ ਜੰਤ ਸਰੀਰ ਹੈ ਜੀ ਆਤਮਾ ਏ ਜੀ ਜਦ ਤੱਕ ਐ ਨੇ ਜਿਵੇਂ ਪੈਦਲ ਹੁੰਦੇ ਨੇ ਪੈਦਲ ਨੂੰ ਚੱਕ ਕੇ ਅਸੀਂ ਜਿੱਥੇ ਮਰਜ਼ੀ ਰੱਖ ਦਈਏ ਜਦ ਮਰਜੀ ਵੀ ਜਿੱਥੇ ਨੂੰ ਵਰਵਾ ਦਈਏ ਸਭ ਦੇ ਸਾਡੇ ਬੱਸ ਵਿੱਚ ਕੁਝ ਨਹੀਂ ਅਸੀਂ ਤਾਂ ਪੈਦਲ ਹਾਂ ਜਿਹੜੇ ਮਰਜ਼ੀ ਖਾਣੇ ਚ ਪਾ ਦੋਏ ਇੱਥੇ ਤਾਂ ਖੇਡਣਾ ਹੈ ਹਿਲ ਇਹ ਨੂੰ ਲੈਣਾ ਇੱਥੇ ਜਾਣ ਕੇ ਜਾਣ ਕੇ ਵਰਵਾ ਕੇ ਫਿਰ ਜਨ ਦੇਣਾ ਫਿਰ ਕਿਹੜਾ ਤੇ ਜਾਂਦਾ ਹੋ ਜਨ ਦੇਣਾ ਵੀ ਉਹਦੇ ਹੱਥ ਚ ਫੇਰ ਤੇ ਭੇਜਣਾ ਕਿਤੇ ਲੈ ਕੇ ਜਾਣਾ ਕੀ ਰੁਸਾਨ ਹੋ ਗਿਆ ਕਹ ਲੈ ਵੀ ਉਹ ਉਦੋਂ ਚੰਗੀ ਜਗ੍ਹਾ ਭੇਜ ਦੇਣ ਕਿਆ ਚੰਗੀ ਜਗ੍ਹਾ ਤੇ ਘੜਬੜ ਕਰਦਾ ਮਾੜੀ ਜਗ੍ਹਾ ਭੇਜ ਦੇਣ ਚੰਗੀ ਜਗ੍ਹਾ ਭੇਜਿਆ ਸੀ ਨਹੀਂ ਚੱਲਦਾ ਠੀਕ ਕਹਦੇ ਆ ਜਾ ਫਿਰ ਮਾੜੀ ਜਗ੍ਹਾ ਭੇਜਦਾ ਚੱਲ ਇਧਰ ਆ ਪਰ ਕਰਤਾ ਜੈਡ ਵੋਟ ਕਰਤਾ ਹੱਥ ਚ ਹੀ ਉਹਦੇ ਹੁਣ ਸਾਨੂੰ ਉਹ ਪਿਛਲੀ ਜਿਹੜਾ ਪੜਨੇ ਤੇ ਪਿਛੇ ਵਾਲਾ ਨਹੀਂ ਦੀਦਾ ਰੱਖਾ ਗੱਲ ਨਾ ਹੈ ਪੜਨੇ ਤੇ ਪਿਛੇ ਵਾਲੀ ਖੇਲ ਹੀ ਨਹੀਂ ਦੀ ਸਾਹਮਣੇ ਦਾ ਦੀਦਾ ਜੋ ਖੇਲ ਹੋ ਰਹੀ ਹੈ ਸਾਹਮਣੇ ਖਾਦੇ ਉਹ ਤਾਂ ਦੀਦੀ ਹੈ ਜਿਹੜਾ ਖੇਲ ਲੈ ਉਹ ਨਹੀਂ ਦੀ ਬਹੁਤ بڑا ਕੋਈ ਆਦਮੀ ਹੈ ਉਹ ਜਲਬ ਕਰਦਾ ਰੂ ਪਾਵਰਾਂ ਦੇਤੀ ਪਹਿਲਾਂ ਖੋਗੇ ਪਾਵਰਾਂ ਇਹ ਜੇ ਨੀਚ ਘਰ ਜਪਤਾ ਜਿੱਥੇ ਰੋਟੀ ਵੀ ਬਣਦੀ ਆ ਆਪਾਂ ਨੂੰ ਵੀ پتہ ਵਿਆत्मा ਕੀ ਨਹੀਂ ਕਿੱਥੋਂ ਆਈ ਹੋਈ ਐ ਸਾਨੂੰ ਉਹਦਾ ਰਹਿਮ ਕਹਿੰਦਾ ਉਹ ਪਾਗਲਾ ਨੂੰ ਰਹਿਮ ਕਹਦਾ ਨਹੀਂ ਹੁੰਦਾ ਉਹ ਪਤਾ ਉਹਦੇ ਬਾਰੇ ਸਾਨੂੰ ਪਤਾ ਨਹੀਂ ਉਹਦੇ ਬਾਰੇ ਜਿਹੜੇ ਜ਼ਿਆਦਾ ਕਰਦੇ ਨੇ ਰਹਿਮ ਲੋਕ ਭਲਾਈ ਦੇ ਕਹੋ ਪਾਗਲ ਰਹੋ ਗੁਰੂਆਂ ਨੇ ਭਗਤਾਂ ਨੇ ਕਹਿੰਨੀ ਕੀਤਾ ਪਰ ਉਹ ਜੋ ਉਹਨਾਂ ਨੂੰ ਨਹੀਂਦਾ ਸੀ ਉਹ ਸਮਰਾਥਾ ਉਹਨੇ ਜਿਆਦਾ ਪਾਏ ਨੇ ਇਹ ਬਿਵਾਰ ਸੀ ਖਤਰਨਾਕ ਹੋ ਮਾਰੀ ਸੀ ਇਹਨਾਂ ਨੂੰ दारू ਦਿੱਤੀ ਹੈ ਦੁੱਖੇ ਰੋਗ ਨਹੀਂ ਦਿੱਤਾ ਤੁਸੀਂ ਉਹਨੂੰ ਰੋਗ ਸਮਝਦੇ ਹੋ ਉਹ ਦਾਰੂ ਉਹਨੂੰ ਸਮਝਦੇ ਨੇ ਉਹ ਭਰਤੋਸ ਦੁੱਖ ਨੂੰ दारू ਸਮਝਦੇ ਨੇ ਜਿਹੜਾ ਦਿੱਤਾ ਤੁਸੀਂ ਉਹਨੂੰ ਰੋਗ ਸਮਝਦੇ ਹੋ ਜਿਹੜੇ ਜਿਆਦਾ ਦੇਹਲੂ ਆਦਮੀ ਨੇ ਲੋ ਆਪਣੇ ਆਪ ਨੂੰ ਸਮਝਦੇ ਲੋਕ ਭਲਾਈ ਦਾ ਕੰਮ ਕਰਨ ਵਾਲੇ ਉਹ ਉਹਨੂੰ ਰੋਗ ਸਮਝਦੇ ਨੇ ਬਾਹਰ ਕਰਦੇ ਡਾਕਟਰ ਨੂੰ ਦਵਾਈ ਦਿੱਤੀ ਤੁਸੀਂ ਉਹਦੀ ਆਕਸੀਜਨ ਲਾ ਕੇ ਉਹਦੇ ਨੂੰ ਸੀਸੀ ਦੇਣ ਲੱਗੇ ਦੁੱਧ ਦੀ ਵਰਜੂਗਾ ਉਹ ਆਕਸੀਜਨ ਲੱਗੇ ਰਹਣ ਦੋ ਜਿਹਨੂੰ ਬਚਾਉਣਾ ਹੈ ਆਕਸੀਜਨ ਜੇ ਲਾ ਦਿੱਗੇ ਉਹਦੇ ਨੂੰ ਕੋਈ ਖਾਣ ਵਾਲੀ ਚੀਜ਼ ਦੇਈਏ ਪਰ ਆਸਪਾਈਏ ਜੂਸ ਪਾਈਏ ਤਖੜਾ ਖਰੀਏ ਤਖੜਾ ਹੋਜੂ ਅਾਬਰ ਪਾਰ ਜਿੰਨੇ ਲੋਕ ਭਲਾਈ ਵਾਲੇ ਕੰਮ ਨੇ ਜਿੰਨੇ ਅਸੀਂ ਪੁੰਨ ਕਰਦੇ ਆ ਪੁੰਨ ਸੋਚਦੇ ਉਹੋ ਹੀ ਖਤਰਨਾਕ ਨੇ ਪਾਪ ਨੇ ਉਹ ਪਾਪ ਪੁੰਨ ਤੇ ਪਹੀ ਕਹਾਵਤ ਇੱਥੇ ਆ ਕੇ ਪਾਪ ਉਹਨੂੰ ਕਹਾਵਤ ਬਣ ਗਈ ਬਈ ਲੋਕਾ ਦੀ ਕਹਾਵਤ ਬੇਵਕੂਫਾਂ ਦੀ ਕਹਾਵਤ ਹੈ ਅਗਿਆਨੀਆਂ ਦੀ ਕਹਾਵਤ ਹੈ ਜਿਹੜੇ ਧਾਰਮਿਕ ਬਣਦੇ ਨੇ ਉਹਨਾਂ ਦੀ ਕਹਾਵਤ ਹੈ ਜਿਹੜੇ ਜ਼ਿਆਦਾ ਦਿਾਲੂ ਬਣਦੇ ਨੇ ਉਹਨਾਂ ਦੀ ਕਹਾਵਤ ਹੈ ਦਿਾਲੂ ਦਾ ਇੱਕੋ ਹੀ ਹੈ ਜਿਹੜੇ ਆਪਣੇ ਆਪ ਨੂੰ ਦਾਤਾ ਸ਼ੋਅ ਕਰਨ ਵਾਲੇ ਉਹਨਾਂ ਦੀ ਕਹਾਵਤ ਹੈ ਪੁਰਾਣੀ ਪੁਰਾਣੀ ਬੜਾਈ ਉਹਨੇ ਬਣਾਇਆ ਹੈ ਧਾਰਮਿਕ ਆਹ ਧਰਮ ਸੱਚਖੰਡ ਦਾ ਬਣਾਇਆ ਜੋ ਸਿੱਖਾ ਜ ਕਰ ਰਹੇ ਨੇ ਸਾਰਾ ਹੀ ਸੱਚਖੰਡ ਤੋਂ ਖਲਾਫ ਕਰ ਰਹੇ ਇਹ ਤਾਂ ਬੰਗਾਲੀ ਗੱਲ ਹੈ ਜੇ ਤੁਹਾਨੂੰ ਜੇ ਇੰਗਰੇਜ਼ਾਂ ਦੀ ਨਕਲ ਕਰਦੇ ਨੇ ਜਿੰਨਾ ਚਿਰ ਦੁਖੀ ਰਹਾ ਖਾਲਸਾ ਤਰੀਬ ਰਹਾ ਉਹਨਾ ਚਿਰ ਖਾਲਸਾ ਪੱਕਾ ਰਹਾ ਜਿਉ ਜੋ ਅਮੀਰ ਹੁੰਦਾ ਚਲਾ ਗਿਆ ਬੇੜਾ ਘਰ ਖੁੰਦਾ ਚਲਾ ਗਿਆ ਗੁਰੂ ਤੋਂ ਦੂਰ ਹੁੰਦਾ ਚਲਾ ਗਿਆ ਅੱਜ ਅਸੀਂ ਗੁਰੂ ਤੋਂ ਇੰਨੇ ਦੂਰ ਸੱਚ ਤੋਂ ਇੰਨੇ ਦੂਰ ਬਾਇਆ ਜੋ ਜ਼ਿਆਦਾ ਸਭੇ ਅੱਜ ਸਭ ਕੁਝ ਹੈ ਗੁਰੂ ਨਹੀਂ ਦਾ ਸੱਚ ਤੇ ਬਨਾ ਤਾਂ ਸਭ ਫਿਰ ਨਾਸਵੰਤ ਹੈ ਆਸਰਾ ਤੱਕ ਲਿਆ ਗੁਰੂ ਆਸਰਾ ਕਿਹੜਾ ਸੀ ਗੁਰੂ ਦਾ ਉਹਨੂੰ ਛੱਡ ਕੇ ਜਿਹਨੂੰ ਅਸੀਂ ਸੰਗਤ ਬਣਾਇਆ ਜਿਹਦੀ ਸੰਗਤ ਕੀਤੀ ਹੈ ਜਿਹਦਾ ਆਸਰਾ ਬਣਿਆ ਉਹ ਬੜਾ ਕਮਜ਼ੋਰ ਆਸਰਾ ਮੇਰੀ ਸੰਗਤ ਕੋਚ ਸੋਚ ਦਰ ਉਹ ਕਰਮ ਕੀ ਕੁਟਲਤਾ ਕੁਟਲ ਦਿੱਤੀ ਕੁਟਲ ਤਾਂ ਹੀ ਕਰਮ ਹੋਇਆ ਸਕ ਜਨਮ ਕੁਪਤੀ ਜਿਹੜਾ ਹੁਕਮ ਦਾ ਮੇਰਾ ਹੁਕਮ ਤੋਂ ਪਹਿਲਾਂ ਹੋਇਆ ਨੋਕਮ ਕੀ ਦੇ ਹੀ ਮੇਰਾ ਜਨਮ ਜਿਹੜੀ ਮੇਰੀ ਮਰਜ਼ੀ ਪੈਦਾ ਹੋਈ ਹੈ ਇਹ ਜਨਮ ਮਰਜ਼ੀ ਕਿਉਂ ਪੈਦਾ ਹੋਗੀ ਇਹ ਮਰਜ਼ੀ ਦੁਨੀਆ ਦੀਆਂ ਸਾਰੀਆਂ ਮਰਜ਼ੀਆਂ ਦਾ ਬਿਮਾਰ ਜਿੰਨੇ ਰੋਗ ਨੇ ਸੰਸਾਰ ਦੇ ਚਾਹੇ ਸਰੀਰਕ ਨੇ ਚਾਹੇ ਮਾਨਸਿਕ ਨੇ ਸਾਰਿਆਂ ਦੀ ਮਾਂ ਮਰਜੀ ਹੈ ਸੰਸਾਰ ਦਾ ਕੋਈ ਦੁੱਖ ਦੁੱਖ ਨਹੀਂ ਰਹਿੰਦਾ ਜੇ ਵਰਜੀ ਛੱਡ ਦੀਏ ਸੰਸਾਰ ਦਾ ਸੁੱਖ ਜਿਹੜਾ ਉਹਦੀ ਇੱਛਾ ਨਹੀਂ ਰਹਿੰਦੀ ਜੇ ਮਰਜੀ ਛੱਡ ਫਿਰ ਕੋਈ ਜੁੜੀ ਰਹਿੰਦਾ ਜਿਹੜਾ ਚਲਾਉਂਦਾ ਨਾ ਪਿੱਛੇ ਖੇਲਦਾ ਰੱਦਾਂ ਨੂੰ ਉਹਦੀ ਮਰਜ਼ੀ ਤੇ जो ਏ ਜਦੋਂ ਤੂੰ ਚਲਾਇਆ ਤੇ ਮੇਰੇ ਚੱਲਦਾ ਐਂਦਾ ਕਹਿੰਦਾ ਉਹ ਮੇਂ ਨਹੀਂ ਚੱਲਦਾ ਅਜੀ ਖੇਲਦੇ ਹਾਂ ਕੋੜਾ ਕਹਿੰਦਾ ਮੈਨੂੰ ਨਹੀਂ ਚੱਲਦਾ ਮੈਨੂੰ ਤਾਂ ਕਹਾ ਮਾਰ ਦੂ ਕਹਿ ਦੂਗਾ ਬਸ ਆਹ ਗੱਲ ਐ ਐ ਜੋ ਸਮਝਾਈ ਐ ਪੱਟੀ ਕਹਿੰਦੇ ਖੇਲਦੇ ਆਂ ਅਸੀਂ ਜੇ ਇੱਛਾ ਵੀ ਰੱਖ ਲਈ ਹੋਵੇ ਤਾਂ ਵੀ ਕੁਝ ਨਹੀਂ ਕਰ ਸਕਦੀ ਜੇ ਘੋੜਾ ਇੱਛਾ ਵੀ ਰੱਖਦਾ ਹੋਵੇ ਕਿ ਮੈਂ ਇਹ ਘਰ ਚ ਨਹੀਂ ਜਾਣਾ ਜਿਵੇਂ ਚਾਕੇ ਰੱਖਦੇ ਨੇ ਉਹਦਾ ਚਲਦਾ ਜ਼ੋਰ ਕੁਛ ਇਹੋ ਜਿਹਾ ਹੀ ਸਾਡਾ ਤੁਸੀਂ ਡਰ ਕਰ ਕੁਝ ਨਹੀਂ ਸਕਦੇ ਸੋਚ ਸਕਦੇ ਡਰ ਕਹਿੰਦੇ ਨੇ ਸੋਚ ਸਕਦਾ ਹੋਵੇ ਕਰ ਨਹੀਂ ਸਕਦਾ ਸੋਚ ਸਕਦੇ ਆ ਉਸ ਆਪਣੀ ਸੋਚ ਨੂੰ ਅਗਲੀ ਜਾਮਾ ਨਹੀਂ ਪਹੁੰਚਾ ਸਕਦੇ ਅਗਲੀ ਜਾਮਾ ਉਹੀ ਉਹ ਜਿਹੜੀ ਉਹਦੀ ਪਿਛਲੇ ਦੀ ਸੋਚ ਉਹਦੀ ਗੁਰਜੀਆ ਜਦ ਸਾਡੀ ਮਰਜ਼ੀ ਚੱਲਦੀ ਹੋਈ ਨਹੀਂ ਫਿਰ ਮਰਜ਼ੀ ਦੇ ਪਿੱਛੇ ਲੱਗ ਕੇ ਅਸੀਂ ਜਿਹੜੀ ਸਮਝ ਹੈ ਬੇਸਮਝੀ ਕਿਉਂ ਕੀਤੀ ਹੋਈ ਹੈ ਜੋ ਕੰਮ ਕਰਨਾ ਹੈ ਤੇ ਉਹ ਕਿਉਂ ਛੱਡਿਆ ਹੋਇਆ ਉਹ ਦੇ ਛੱਡਦੇ ਦੇ ਛੱਡੋਗੇ ਫਿਰ ਕੀ ਹੈ ਜੀਵਰ ਜਿਹੜਾ ਹੈਗਾ ਮਰਜੀ ਦਾ ਦੇ ਵਾਸਤੇ ਕੌਡੀ ਵਾਸਤੇ ਕਦੇ ਵਾਸਤੇ ਨਹੀਂ ਛੱਡਦੇ ਬਾਇ ਵਾਸਤੇ ਪਦਾਰਥਾਂ ਵਾਸਤੇ ਨਹੀਂ ਮਰਜੀ ਛੱਡਦੇ ਨੂੰ ਇਹ ਤੋਂ ਘਾਟਾ ਨਾ ਪੈ ਜਾਇਆ ਤੁਹਾਨੂੰ ਇਹਨੂੰ ਹੋ ਜਾਇਆ ਦੌਰ ਹੋ ਜਾ ਸੰਸਾਰ ਵਾਸਤੇ ਨਹੀਂ ਨੂੰ ਮਰਜੀ ਛੱਡਦੇ ਸੰਸਾਰ ਕੀ ਹੈ ਕੌਡੀ ਛੱਡਿਆ ਹੈ ਕੀ ਹੈ ਰਤ ਇਹਨੇ ਅਕਲ ਮੰਨ ਤਾ ਗ ਰਤਨ ਵਾਸ ਤੇ ਆ ਗਿਆ ਹੋਇਆ ਕੌਡੀ ਫੜੀ ਹੋਈ ਸਾਡੀ ਅਕਲ ਹੈ ਹੁਣ ਕਿੰਨੇ ਕਸੀ ਅਕਲ ਬੰਦ ਤਾ ਕਿਉਂ ਸਾਨੂੰ ਵਾਰੀ ਅਕਲ ਨਹੀਂ ਬੰਦਦੀ ਤੇ ਚਲ ਜਾ ਹੁਣ ਲਾ ਲੋ ਸਭ ਲਈ ਸਭ ਬਚ ਸਿਰਫ ਅਸੀਂ ਵਿਚਾਰਿਆ ਨਹੀਂ ਕੁਝ ਵੀ ਤਾਂ ਸਾਨੂੰ ਅਸੀਂ ਭਲੇਖਾ ਇਹਨਾਂ ਨੇ ਵਿਚਾਰਿਆ ਹੋਇਆ ਵਿਚਾਰਿਆ ਦੇ ਸਭ ਕੁ ਦਿਖਣ ਲੱਗ ਜਾਂਦੇ ਅਸੀਂ ਆਪਣੇ ਆਪ ਨੂੰ ਨਹੀਂ ਵਿਚਾਰਿਆ ਅਸੀਂ ਖੜੇ ਕਿੱਥੇ ਹਾਂ ਸੰਸਾਰ ਨਹੀਂ ਵਿਚਾਰਦਾ ਨਾ ਵਿਚਾਰਿਆ ਥੋਡੇ ਕੋਲ ਤਾਂ ਦੱਸਿਆ ਹੈ ਵਿਚਾਰਨ ਨੂੰ ਪਰ ਅਸੀਂ ਸੰਸਾਰ ਦੀ ਰੇਸ ਕਰਦੇ ਹਾਂ ਸੰਸਾਰ ਨੇ ਸਾਡੀ ਰੇਸ ਕਰ ਲਈਏ ਸੰਸਾਰ ਕਹਿੰਦਾ ਸਿੱਖ ਧਰਮ ਕੀ ਹੈ ਜੇ ਸੇਖਾਬ ਛੱਡੀ ਫਿਰਦੇ ਨੇ ਸੇਖਾਬ ਛੱਡੀ ਫਿਰਦੇ ਨੇ ਸੇ ਕਹੇ ਨਹੀਂ ਨਹੀਂ ਉਹਦੀ ਉਹਦਾ ਧਰਮ ਠੀਕ ਹੈ ਬੜਾ ਪੈਸਾ ਉਹਨੂੰ ਸਾਰੇ ਲੋਕ ਵੀਰ ਨੇ ਉਹ ਸਾਰੇ ਲੋਕ ਬੜੇ ਲਖੇ ਨੇ ਅਸਪੋਕਸ ਮੈਂ ਇਹ ਪ੍ਰਚਾਰ ਕਰਦਾ ਹੁੰਦਾ ਸੀ ਜਾਂ ਮੈਂ ਜਾਂਦਾ ਸੀ ਮੈਂ ਕਹਿੰਦਾ ਤਾਂ ਮਤਮਰੀ ਹੋਈਏ ਇਹ ਤਾਂ ਮਾਇਆ ਮਾਇਆ ਇਹਦੇ ਕੋਲ ਹੋਰ ਕੁਝ ਨਹੀਂ ਹੈ ਇਹਦਾ ਦ੍ਰਿਸ਼ਟੀਕੋਣ ਹੈ ਮਾਇਆ ਨਾਲ ਉਹੀ ਹੁੰਦੀ ਆ ਦੇਖੀ ਲੈ ਤੇਰੇ ਦਾ ਲੀਡਰ ਹੀ ਉਹੀ ਹੋਗੇ ਨਾ ਫੇਰ ਇਹ ਤੇ ਗਰੀਬੀ ਦਾ ਦਾ ਹਮਾਰੀ ਹੈ ਗਰੀਬੀ ਦਾ ਦਾ ਹਮਾਰੀ ਕਿੱਥੇ ਗਈ ਫੇਰ ਹਮ ਗਰੀਬ ਬਸ ਕੀਰੋ ਤੇਰੇ ਹਰ ਰਾਖ ਰਾਖ ਵੱਡ ਵੱਡਾ ਵੱਡ ਨਾਲੇ ਇਹ ਪ੍ਰਚਾਰ ਕਰਦੇ ਨਾਨਕ ਜੀਨ ਕੇ ਸੰਗਸਾਥ ਵੱਡੇ ਨਾਲ ਕਾ ਵੱਡੇ ਨਾਲ ਸੇ ਕਾ ਫ੍ਰੀਜ਼ ਇਹ ਵੀ ਕਰਦੇ ਵੱਡੇ ਬਣਨਾ ਚਾਹੁੰਦੇ ਵੱਡੇ ਬਣਨਾ ਚਾਹੁੰਦੇ ਆ ਮੂੰਹ ਨਾਲ ਕੁਝ ਬੋਲਦੇ ਆ ਚਾਹੁੰਦੇ ਉਹੀ ਆ ਅਖਰ ਕਿਹਦੇ ਨਾਲ ਚਲਾਕੀ ਕਿਹਦੇ ਨਾਲ ਕਰਦੇ ਕਿਹਦੇ ਨਾਲ ਚਲਾਕੀ ਕਰਦੇ ਧੋਖਾ ਕਰਦੇ ਆ ਆਪਣੇ ਆਪ ਨਾਲ ਬਲੈਕਮੇਲ ਕਰਦੇ ਆ ਆਪਣੇ ਆਪ ਨੂੰ ਕੀ ਜ਼ਰੂਰੀ ਕਰਨਾ ਹੈ ਨੁਕਸਾਨ ਕਰਦੇ ਆਪਣੋ ਜੇ ਰਤਨ ਤੇ ਆ ਕੇ ਕੌਡੀ ਫੜੀ ਹੋਈ ਹੈ ਕੌਡੀ ਪਿੱਛੇ ਭਜਦਾ ਤਾਂ ਨੁਕਸਾਨ ਆਪ ਨੂੰ ਆ ਕੇ ਜ਼ਰੂਰ ਕੋਈ ਨਹੀਂ ਹੈ ਪੈਰ ਕੋਹੜਾ ਆਪਣੇ ਮਾਰ ਸਕਦੇ ਆਂ ਅਸੀਂ ਦੂਜੇ ਦੇ ਨਹੀਂ ਮਾਰ ਸਕਦੇ ਪੈਰ ਕੋਹੜਾ ਮਾਰਿਆ ਦੂਜੇ ਦੇ ਬਾਹਰ ਨਹੀਂ ਸਕਦਾ ਦੂਜੇ ਦੇ ਮਾਰ ਕੇ ਦਿਖਾਵੇ ਆਪਣੇ ਮਾਰ ਸਕਦਾ ਪੈਰ ਕੋਹੜਾ ਦੂਜੇ ਨੇ ਮਾਰੂ ਜੀਦਾ ਇਹ ਦੂਜੇ ਨੇ ਮਾਰੂ ਘਰੋ ਜਿਹੜਾ ਉਹ ਪਿੱਛੇ ਬੈਠਾ ਦੂਜਾ ਦਾ ਮਾਲਕ ਮੈਨੂੰ ਮਾਰਦੇ ਸੂਰ ਉਹੜਾ ਸੰਗਰਾਥਾ ਬੈਠਾ ਪਿੱਛੇ ਸੰਗਰਾਥ ਗੁਰੂ ਸਰ ਹੱਥ ਧਰਿਓ ਸਾਰਿਆਂ ਦਾ ਸਰ ਤੇ ਉਹਦਾ ਹੱਥ ਹੈ ਉਹ ਦੂਜੇ ਦੇ ਘਰੇ ਮਾਰਦੇ ਤੂੰ ਘਾਣਾ ਤੈਨੂੰ ਆਪਣੇ ਘਰ ਲੈ ਕੋੜਾ ਤੈਨੂੰ ਦੇਤਾ ਭਾ ਲੈ ਆਪਣੇ ਆਪਣੇ ਮਾਰ ਸਕਦਾ ਉਦੋਂ ਜ਼ਿਆਦਾ ਇਹਦਾ ਘਾੜਾ ਚੱਲੇ ਨਹੀਂ ਸਕਦਾ ਦੂਆ ਪਾਸੇ ਉਹਦਾ ਆਪਣਾ ਸਗਾ ਘਾੜਾ ਜੇ ਦੂਆ ਪਾਸੇ ਨੂੰ ਜਾਂਦਾ ਨਾ ਆਪਦੇ ਪਰੇ ਨੂੰ ਫਿਰ ਉਹਦੇ ਨਾਲ ਦਾ ਮੁਕਾਬਲਾ ਕਰਦਾ ਹਾਂ ਹਾਂ ਜੇ ਉਹੀ ਚਾਹੇ ਕਿਸੇ ਹੋਰ ਦੇ ਬਰੌਡਰ ਫਿਰ ਬੈਸਲ ਉਹ ਤਾਂ ਜਿਹਦੇ ਵਰਜੀ ਪਰਵਾਹ ਹੋਵੇ ਇਹ ਤੇ ਆਪਣੀ ਵਰਜੀ ਦੀ ਗੱਲ ਕਰਦਾ ਇਹ ਹਕੀਕਤ ਹੈ ਜੇ ਬਾਣੀ ਵਿਚਾਰ ਲਈਏ ਤਾਂ ਭਗਤੀਆਂ ਵਿਚਾਰਨ ਦੇ ਵਿੱਚ ਅਸੀਂ ਮੂਰੇ ਆ ਭਗਤੀਆਂ ਸਾਡੇ ਸਾਈਡ ਤੇ ਭਗਤੀ ਸਪੋਰਟ ਕਰਦੀ ਹੋਵੇ ਜਦੋਂ ਅਸੀਂ ਵਿਚਾਰਦੇ ਹਾਂ ਹਕੀਕਤ ਨੂੰ ਜੇ ਸਾਨੂੰ ਸਮਝ ਆ ਗਈ ਰਾਜਾ ਰਾਮ ਕੀ ਕਹਾਣੀ ਦੀ ਤੇ ਭਗਤੀਆਂ ਦੀ ਲੋੜ ਨਹੀਂ ਸਾਨੂੰ ਹੈ ਉਹ ਤਾਂ ਸਾਨੂੰ ਸਪੋਰਟ ਦਿੰਦੀ ਹੋਵੇ ਰਸਤਾ ਸਾਨੂੰ ਆਪੇ ਬਣਦਾ ਰਸਤਾ ਆਪੇ ਬਣਦਾ ਵਿਚਾਰ ਦੇ ਵਿੱਚ ਰਸਤਾ ਚਿੱਟਾ ਆਪੇ ਦਿਖੀ ਜਾਂਦਾ ਹੈ ਇਹ ਤਾਂ ਸਿਰਫ ਸਾਨੂੰ ਸਪੋਰਟ ਹੁੰਦੀ ਹੈ ਵੀ ਹਾਂ ਅਸੀਂ ਠੀਕ ਜਾ ਰਹੇ ਜਿਹੜੇ ਬਾਣੀ ਨੂੰ ਲੈ ਕੇ ਰਸਤਾ ਕੱਢਣਗੇ ਉਹ ਨਹੀਂ ਨਿਕਲਣਗੇ ਬਾਣੀ ਦੀਆਂ ਬਖਦੀਆਂ ਨੂੰ ਜੋੜ ਕੇ ਰਸਾ ਕੱਢਣਗੇ ਕਦੇ ਨਹੀਂ ਨਿਕਲਣਾ ਨਿਕਲਣਾ ਰਸਾ ਵਿਚਾਰ ਚੋਂ ਕਦੇ ਨਹੀਂ ਨਿਕਲਦਾ ਰਸਾ ਜੋ ਲਾਲੂ ਵਿਦਵਾਨ ਨੇ ਤਾਂ ਹੀ ਨਿਕਲਦਾ ਉਹ ਬਾਣੀ ਦੀਆਂ ਬਖਦੀਆਂ ਜੋੜ ਕੇ ਰਸਤਾ ਖੜਦੇ ਨੇ ਰਸਤਾ ਤਾਂ ਇਹਨਾਂ ਕੱਲ ਗੁੱਠੀ ਵਾਲਾ ਇਹਨੂੰ ਗੁੱਠੀ ਵਾਲਾ ਕਹਿੰਦੇ ਹੋ ਸੀ ਗੁੱਠੀ ਵਾਲਾ ਫਿਰ ਜਾਓ ਹੁਸ਼ਿਆਰੀ ਕਰਦੇ ਹੋਸ਼ਿਆਰੀ ਕਰ ਰਹੇ ਗੁਰਬਾਣੀ ਦੇ ਅਧਾਰ ਤੇ ਆਪਣੇ ਵਿਚਾਰ ਧਾਰਾ ਆਪਣੇ ਅੰਦਰ ਝਾਕ ਕੇ ਦੇਖੋ ਆਪਣੜੇ ਗੁਰਬਾਣ ਵਿੱਚ ਸਰਨੀ ਮੰਗ ਤੇ ਗੁਰਬਾਣ ਉੱਤਰ ਬਾਹਰ ਗੁਰਬਾਣੀ ਗੁਰਬਾਣੀ ਤਾਂ ਬਾਹਰ ਹੈ ਗੁਰਬਾਣ ਉੱਤਰ ਤਾਂ ਹੈ ਨਹੀਂ ਗੁਰਬਾਣੀ ਇਹਨੂੰ ਕਹਿੰਦੇ ਜੇ ਆਪਣੜੇ ਗੁਰਬਾਣ ਵੇ ਸਰਨੀ ਮੰਗ ਗੁਰਬਾਣੀ ਕੀ ਕਹਿੰਦੀ ਹੈ ਤੂੰ ਕੀ ਕਰਦਾ ਕਿਉਂ ਕਰਦਾ ਇਹ ਗੱਲ ਐ ਤੋ ਲੋਕ ਨੇ ਪਰਵਾਰੀ ਹੋਰ ਕੱਟ ਰੋਕਦੇ ਬਰ ਜਾਣੇ ਸਭ ਬਾਤ ਸਭ ਕੋ ਜਾਣਦਾ ਹੈ ਪਖੰਡਾ ਸਰਬਾਣੀ ਨਹੀਂ ਬਣਉਂਦੀ ਇਹ ਨਹੀਂ ਬਣਉਂਦਾ ਸਾਰੇ ਕੋਥੋਂ ਦੇ ਆਏ ਹੋਰ ਇਹ ਪੰਡਤ ਨੂੰ ਕਹਤਾ ਵੀ ਤੂੰ ਆਪਣੇ ਆਪ ਨੂੰ ਵੱਡਾ ਸਮਝਦਾ ਹੈ ਹਨਵਾੜ ਕਾਹੇ ਨਹੀਂ ਆਇਆ ਭਗਤਾਂ ਦੇ ਵੀ ਲਗੂ ਹੁੰਦੀ ਐ ਗੱਲ ਨਾਨਕ ਦੇ ਵੀ ਲਗੂ ਹੁੰਦੀ ਐ ਇਹ ਗੱਲ ਹਨਵਾੜ ਕਾਹੇ ਨਹੀਂ ਆਇਆ ਸਾਰੇ ਕੋਈ ਨਹੀਂ ਵੀ ਨਾਨਕ ਦੇ ਉੱਤੇ ਪਹੁੰਚ ਗਿਆ ਤੁਸੀਂ ਪਹੁੰਚੇ ਨਹੀਂ ਸਕਦੇ ਸੱਪ ਖੰਡਾ ਹੈ ਤੁਹਾਡਾ ਜੇ ਪ੍ਰਾਣੀ ਤੋਂ ਆਇਓ ਲਾਹਲੇ ਨੇ ਸਾਰਿਆਂ ਵਾਸਤੇ ਹੀ ਹੈ ਤੁਸੀਂ ਕਿਵੇਂ ਕਹਿ ਸਕਦੇ ਹੋ ਹੋਰ ਕੋਈ ਹੋਈ ਨਹੀਂ ਸਕਦਾ ਜਿਹੜੇ ਇਹ ਕਹਿੰਦੇ ਨੇ ਉਹ ਬਲੈਕਮੇਲਰ ਨੇ ਉਹ ਨੈਗੇਟਿਵ ਸੋਚ ਵਾਲੇ ਨੇ ਪਿਛਾ ਖਿੱਚੂ ਨੇ ਡਿਸਆਰਟਡ ਕਰਨ ਵਾਲੇ ਨੇ ਵਾਹ ਦੂਜੇ ਦਾ ਦਿਲ ਟੋੜ ਵਾਲੇ ਨੇ ਸਭ ਤੋਂ ਅਮਨਮਾਨਕ ਟਾਣ ਬੂਰ ਬਚਾਂਗੜਾ ਬਚਾਂਗਵਾ ਬਚਾਂਗਵਾ ਬਚਾਂਗਵਾ ਕਹਿੰਦੇ ਨਹੀਂ ਚੰਗਾ ਚੰਗਵਾ ਹੁੰਦਾ ਚੰਗਾ ਬਚਾਂਗਵਾ ਨਹੀਂ ਜਾਂਦਾ ਮम्मा ਨੈਗੇਟਿਵ ਲੱਗ ਗਿਆ ਚੰਗਾ ਬਹਾ ਹੁੰਦਾ ਚੰਗਾ ਚੰਗੇ ਦੇ ਉੱਤੇ ਮੂਰੇ ਬੰਬਾ ਲਾਤਾ ਬੰਬੇਰਾ ਡਾਕਟਰ ਬਣ ਗਿਆ ਨੰਨੇ ਨਾ ਵੀ ਡਾਕਟਰ ਬਣ ਜਾਂਦਾ ਬੱਬੇ ਨੂੰ ਸੈਰੀ ਲਾਉਣ ਦਾ ਵੀ ਡਾਕਟਰ ਬਣ ਜਾਂਦਾ ਅਰਥ ਆੜਾ ਲਾਉਣ ਦਾ ਵੀ ਡਾਕਟਰ ਬਣ ਜਾਂਦਾ ਕਾਸ਼ ਤੇ ਆਕਾਸ਼ ਬਣ ਗਿਆ ਥਿਰ ਤੇ ਅਥਰ ਬਣ ਗਿਆ ਸਥਿਰ ਤੇ ਅਥਰ ਬਣ ਗਿਆ ਆੜਾ ਨਾੜਾ ਨਿਕਲੇ ਬੜ ਦੰਦਾ ਮਲਤੇ ਵਿਮਲ ਬਣ ਗਿਆ ਬੱਬੇ ਨੂੰ ਸੈਰੀ ਲੌਂਡਰ ਵੀ ਬਣ ਜਾਂਦਾ ਇਸ ਕਰਕੇ ਮੰਮਨ ਲੋਰਟੇ ਵੀ ਬਣ ਜਾਂਦਾ ਪਰ ਗੁਰਮਤ ਦੀ ਡਿਕਸ਼ਨਰੀ ਚ ਹੈ ਗੁਰਮਤ ਵਿੱਚ ਹੈ ਸਾਡੀ ਡਿਕਸ਼ਨਰੀ ਵਿੱਚ ਨਹੀਂ ਹੈ ਵਿਦਵਾਨਾਂ ਦੀ ਡਿਕਸ਼ਨਰੀ ਦੇ ਬਾਹਰ ਹੈ ਲੋ ਏ ਗੁਰਮੁਖੀ ਡਿਕਸ਼ਨਰੀ ਚ ਹੈ ਗੁਰਮੁਖੀ ਰਫਜ਼ ਹੈ ਗੁਰਮੁਖੀ ਡਿਕਸ਼ਨਰੀ ਚ ਹੈ ਬਰਮੁਖਾ ਦੀਆਂ ਗੁਰਮੁਖੀ ਡਿਕਸ਼ਨਰੀ ਅਟੋ-ਅਟੋ ਹੁੰਦੀ ਹੈ ਇਹ ਗੁਰਮੁਖੀ ਭਾਸ਼ਾ ਹੀ ਹੋਰ ਹੈ ਆਕਾਸ਼ ਬਾਲ ਜਿਹੜੀ ਕਹਿੰਦੇ ਰਹੇ ਜਿਹੜੀ ਅਸੀਂ ਬਾਲੀ ਕਿਹ ਆਕਾਸ਼ ਬਾਣੀ ਜਿਹੜੀ ਤੁਰਕੀ ਬਣੀ ਆਕਾਸ਼ ਬਾਣੀ ਨਹੀਂ ਹੈ ਇਹਨੂੰ ਆਕਾਸ਼ ਬਾਣੀ ਵਿਦਵਾਨਾਂ ਨੇ ਬਣਾ ਲਿਆ ਰਿਸ਼ੇ ਹੁਣੇ ਬਣਾ ਲਿਆ ਸਮਝ ਲੈ ਇਸ ਕਰਕੇ ਪ੍ਰਾਵਾਣੀ ਨੂੰ ਬਾਹਰੋਂ ਬੰਦਦੇ ਰਹੋ ਪ੍ਰਾਵਾਣੀ ਵਾਰੋਂ ਨਹੀਂ ਹੁੰਦੀ ਹੈ ਪ੍ਰਾਵਾਣੀ ਉਹ ਬਾਣੀ ਹੈ ਜਿਹੜੀ ਸੰਸਾਰ ਪੈਦਾ ਨਹੀਂ ਹੋਇਆ ਬਾਣੀ ਪੈਦਾ ਹੋ ਗਈ ਸੀ ਪਰਾਪੂਰ ਬੁਲਾ ਪੂਰਵ ਤੋਂ ਵੀ ਪਹਿਲਾਂ ਪਰਾਂ ਹੁੰਦਾ ਇਹ ਪੂਰਵ ਹੁੰਦਾ ਨਾ ਉਹ ਤਾਂ ਉਹ ਤਾਂ ਪਰੇ ਹੁੰਦਾ ਪਰਾਂ ਸਤਨਾਮ ਤੇਰਾ ਪਰਾ ਪੂਰਬਲਾ ਸਤਨਾਮ ਜਿਹੜਾ ਤੇਰਾ ਗੋੜ ਹੈ ਦੌਦ ਦੌਦ ਨੂੰ ਗੋੜ ਹੈ ਤੇ ਤਾਂ ਉਦਯਾਰ ਤੇ ਨਾਮ ਦਾ ਅਰਥ ਹੈ ਹੁੰਦਾ ਜਿਹਦੇ ਨਾਮ ਨੇ ਸਾਰੇ ਗੋੜ ਵਾਚਦੇ ਨੌ ਕਿਹੜੇ ਚੀਜ਼ ਦਾ ਹੁੰਦਾ ਹੀ ਨਹੀਂ ਸਾਡੇ ਧਰਿਆ ਦੇ ਲੋ ਤੁਸੀਂ ਰੋਜ਼ ਬਦਲਦੇ है 200 ਰੁਪਏ ਲੱਗਦਾ ਅਖਬਾਰ ਤੇ ਅਮੋਸਤ ਸਰਕਾਰ ਬਣਦੀ ਹੈ ਤੁਸੀਂ ਰੋਜ਼ ਬਦਲੀ ਆਉਂਦੇ 200 ਰੁਪਏ ਦੇਜੋ ਰੋ ਬਦਲੀ ਜਾਓ ਕੀ ਲੋ ਹੋਇਆ ਤੁਹਾਡਾ ਲੋਕੜਾ ਹੋਇਆ ਤੇ ਤਾਂ ਮੈਂ ਸਮਝਣ ਵਾਸਤੇ ਅਸੀਂ ਰੱਖਿਆ ਲੋਹ ਥੋੜੀ ਹੈ ਕਿਸੇ ਚੀਜ਼ ਦਾ ਕਿਸੇ ਚੀਜ਼ ਦਾ ਕੋਈ ਨਾ ਉਹਦੇ ਚੀਜ਼ ਨੂੰ ਅੰਗਰੇਜ਼ੀ ਚ ਹੋਰ ਕਹਿੰਦੇ ਅਰਬੀ ਚ ਹੋਰ ਕਹਿੰਦੇ ਨੇ ਪੰਜਾਬੀ ਚ ਹੋਰ ਹਿੰਦੁਸਤਾਨ ਜੇ ਕੋਈ ਖਾਸ ਨਾ ਹੋਵੇ ਤੇ ਕੋਈ ਨਾ ਹੋਵੇ ਉਹਨਾਂ ਸਾਰੇ ਸੰਸਾਰ ਚ ਕਿਸੇ ਚੀਜ਼ ਦਾ ਨਾ ਹੁੰਦਾ ਹੀ ਨਹੀਂ ਤਾਂ ਜੜਦਾ ਨਾ ਚੈਤੰਦ ਤਾਂ ਸਾਡੇ ਰੱਖੇ ਗੁਣਵਾਜਿਕ ਰੋਜ਼ ਰੂਟ ਹੁੰਦਾ ਜੀ। ਬਈ ਨੋ ਵੀ ਅਡਾ ਕੇ ਖੈਸੋ ਨੇ। ਇਹਦਾ ਅਸੀਂ ਆਪਣਾ ਕੰਮ ਚੱਲਉ ਹੁੰਦਾ ਸਮਝਣ ਵਾਸਤੇ, ਪਛਾਣ ਵਾਸਤੇ, ਪਛਾਣ ਵਾਸਤੇ। ਕਭੜੀ ਜਾਂਦਾ ਸਾਡਾ। ਕਿਸੇ ਚੀਜ਼ ਦਾ ਕੋਈ ਨਾਂ ਹੁੰਦਾ ਹੀ ਨਹੀਂ। ਜਾਂ ਕਿਸੇ ਚੀਜ਼ ਦਾ ਨਾਂ ਹੀ ਨਹੀਂ ਕੋਈ ਹੁੰਦਾ ਫੇਰ ਨਾਂ ਪਰਮੇਸ਼ਰ ਦਾ ਕਿਹੜਾ ਜਪ ਰਹੇ ਨੇ? ਕਿਹੜਾ ਲੋ ਜਾਪ ਰਹੇ ਨੇ? ਇਸੇ ਚੀਜ਼ ਦਾ ਰੌਲਾ ਉਹ ਕਹਿੰਦੇ ਖੁਦਾ ਆ ਹੁੰਦਾ ਠੀਕ ਆ ਉਹ ਕਹਿੰਦੇ rau ਠੀਕ ਆ ਉਹ ਕਹਿੰਦੇ ਫਲਾਣਾ ਠੀਕ ਹੋ ਗਿਆ ਠੀਕ ਆ ਰੌਲਾ ਵਿਦਵਾਨਾਂ ਲਈ ਇਹ ਕਰਕੇ ਪੰਡਤ ਬੁੱਲਣਾ ਛਾਟੇ ਸੋਹੂ ਇਹ ਤਾਂ ਵਿਦਵਾਨਾਂ ਦੇ ਝਗੜੇ ਪਏ ਨੇ ਜਦੋਂ ਧਰਮ ਵਿਦਵਾਨਾਂ ਦੇ ਹੱਥ ਚ ਆ ਗਿਆ ਸਭ ਜੋ ਹੋ ਗਿਆ ਵਿਦਵਾਨ ਦਾ ਮਤਲਬ ਹੈ ਉਰਖ ਵਿਦਵਾਨ ਦਾ ਬਦਲ ਬੂਰਖੋ ਬੂਰਖਾ ਪੰਡਤ ਗੁਰਬਾਣੀ ਕਹਿੰਦੀ ਹੈ ਯਕਹੋਲ ਕੱਟ ਦਿਓ ਤਾਂ ਗੁਰਬਾਣੀ ਚੋ ਕੱਟ ਕੇ ਦਿਖਾ ਦਿਓ ਭਗਤੀ ਨੂੰ ਮੁਖ ਪੰਡਤ ਪੰਡ ਬੂਰਖ ਪੰਡਤ ਹਕਮਤ ਹੁਜਤ ਬਿਤੋਨੇ ਹੋਰ ਹੈ ਕਿ ਪੰਡਤ ਲਫ਼ਜ਼ੋਦੋ ਉਹਦੇ ਅਸੇ ਅੱਜ ਪੰਡਤ ਵਿਦਵਾਨ ਨੂੰ ਕਹਿੰਦੇ ਉਹਦੀ ਜਗ੍ਹਾ ਲਫ਼ਜ਼ੇ ਬਦਲੇ ਪਰ ਲਫ਼ਜ਼ ਵੀ ਵਿਦਵਾਨੇ ਹੁੰਦਾ ਸੀ ਮੂਰਖ ਪੰਡਤ ਹੈ ਹਕਮਤ ਉਜਤ ਸੰਜੇਤ ਰਿਪਿਆਰ ਪਿਆਰ ਕਾ ਦਾ ਨਮਾਇਨ ਸੰਪਤੀ ਤੁਸੀਂ ਇਹ ਤੋਂ ਕੱਟ ਕੇ ਦਿਖਾਓ ਇਹਨੂੰ ਪੰਪੀ ਨੂੰ ਪੜਦਰ ਮੂਰਖਿਆ ਹੋਇਆ ਬੜੀ ਮੂਰਖ ਵਿਦਿਆ ਬਿਕਰਦਾ ਯੂਨੀਵਰਸਿਟੀ ਕਿਨੇ ਬਣਾਈਏ ਨੇ ਵਿਦਵਾਨਾਂ ਨੇ ਸਰਕਾਰ ਅੰਗੀ ਦੇ ਅਸਰੇ ਚੱਲਦੀ ਇਹ ਨੇ ਵਿਦਵਾਨਾਂ ਨੇ ਰੈਂਕ ਆਉਣ ਦਿੰਦਾ ਹੈ ਵਿਦਵਾਨ ਯੂਨੀਵਰਸਿਟੀ ਗੀਰ ਗੀਰ ਅਸਰੇ ਦੇ ਵਿਦਵਾਨਾਂ ਦੇ ਕਿੰਨੇ ਕਿੰਨੇ ਫੀਸਾਂ ਰੋਲਾ ਪੈਂਦਾ ਕਿ ਨਹੀਂ ਪੈਂਦਾ ਵਿੱਦਿਆ ਵੇਚਦੇ ਨਹੀਂ ਮੂਰਖ ਨੇ ਮੂਰਖੇ ਵਿੱਦਿਆ ਬਿਕਰਦਾ ਬਖਖਟੇ ਬਖਾਏ ਫਿਰ ਦੇ ਜੋ ਟੀਏ ਵਾਰਨ ਕਰਦੇ ਬੜੇ ਹੋਰ ਕੀ ਕਰਨਗੇ ਮੂਰਖਾਂ ਨੇ ਪੜਾਏ ਮੂਰਖ ਹੁੰਦੇ ਨੇ ਮੂਰਖਾਂ ਦੇ ਜਲੇ ਮਹਾ ਜੁੱਤੀਆਂ ਨਾਲ ਨਾ ਮਾਰਨਗੇ ਹੋਰ ਕੀ ਮਾਰਨਗੇ ਕਿਉਂ ਨਾ ਮਾਰਨਗੇ ਜੁੱਤੀਆਂ ਨਾਲ ਦੇ ਤੁਸੀਂ ਸਕੂਲਾਂ ਨਹੀਂ ਪੜ੍ਹਾਉਣਾ ਨਹੀਂ ਕਹਿਣਾ ਨਹੀਂ ਟਿਊਸ਼ਨ ਲਖਾਓ ਤੇ ਉਹ ਨਹੀਂ ਜਾਣਦੇ ਉਹ ਜਾਣਦੇ ਨਹੀਂ ਪਬਲਕਾ ਕਾ ਸਭ ਜਾਣਦੀ ਹੈ ਇਹ ਪਬਲਕਾ ਕਾ ਸਭ ਜਾਣਦੀ ਹੈ ਉਹ ਕੁੱਤੇ ਜਾਣ ਜਾਣਦੇ ਅੱਖ ਪਛਾਣਦੇ ਨੇ ਆਪਣੇ ਪਰਾਇਏ ਨੂੰ जानवर जानਦੇ ਨੇ ਛੋਟਾ ਜਿਹਾ 6 ਮਹੀਨੇ ਦਾ ਨਿਆਣਾ ਜਾਣਦਾ ਸਮਝ ਅੱਖ ਪਛਾੜਦਾ ਹੈ ਤੁਸੀਂ ਕੀ ਕਹਿੰਦੇ ਹੋ ਵੀ ਸਾਰੇ ਇੱਕ ਦੂਜੇ ਨੂੰ ਜਾਣਦੇ ਹੀ ਨਹੀਂ ਹਾਂ ਵਿਦਵਾਨ ਸਮਝ ਸਕਦੇ ਨੇ ਨਹੀਂ ਜਾਣਦੇ ਤਾਂ ਹੀ ਜੁੱਤੀਆਂ ਖਾਂਦੇ ਨੇ ਇਹਨਾਂ ਨੂੰ ਵੀ ਹੋ ਸਕਦਾ ਜਿੰਨੇ ਧਰਮ ਵਿਗਾੜੇ ਨੇ ਵਿਦਵਾਨਾਂ ਦੇ ਵਿਗਾੜੇ ਹੋਏ ਨੇ ਇਹ ਬ੍ਰਮ ਗਿਆਨ ਜਦੋਂ ਮੂਰਖਾਂ ਦੇ ਹੱਥੇ ਚ ਆ ਜਾਂਦਾ ਵਿਦਵਾਨਾਂ ਦੇ ਹੱਥੇ ਚ ਆ ਜਾਂਦਾ यह ਡੇਜਨ हो ਜਾਂਦਾ ਹੈ। বেদ ਜਿੰਨਾ ਜਰ ਬ੍ਰਹਮੇ ਦੇ ਹੱਥ 'ਚ ਰਹੇ ਜਿੰਨਾ ਜਰ ਗਿਆਨਵਾਨਾਂ ਦੇ ਬੁੱਧੀਵਾਨਾਂ ਦੇ ਹੱਥ 'ਚ ਰਹੇ ਉਹਨਾਂ ਜਰ ਪ੍ਰਚਾਰ ਸਹੀ ਰਹਾ ਜਦੋਂ ਵਿਦਵਾਨਾਂ ਦੇ ਹੱਥ 'ਚ ਆ ਗਏ ਵਿਦਵਾਨ ਚੱਲਦੇ ਨੇ ਸਰਕਾਰ ਨਾਲ ਸਾਡੇ ਜਿਹੜੀਆਂ ਇਹ ਸਰਕਾਰ ਤੋਂ ਆਈ ਹੋਈ ਗੱਲ ਹੈ ਇੱਕ ਔਰਤਾਂ ਨੂੰ ਬਰਾਬਰ ਸਮਝਿਆ ਗੁਰਬਾਣੀ ਨੇ ਇਹ ਸਰਕਾਰ ਤੋਂ ਆਈ ਹੋਈ ਗੱਲ ਹੈ ਗੁਰਬਾਣੀ ਨਹੀਂ ਮੰਦੀ ਇਸ ਨਾਲ ਗੁਰਬਾਣੀ ਦੇ ਖਿਲਾਫ ਹੈ ਫੁਰਾਂ ਦੇ ਨਾਲ ਮੰਦੀਆ ਨਹੀਂ ਹੈ ਇੱਕ ਪੰਕਤੀ ਦੇ ਗਲਤ ਅਰਥ ਉਹ ਕਿਉ ਮੰਦਾ ਆਖੀਏ ਜਿੱਤ ਜੰਮੇ ਰਾਜਾਨ ਇਹਦਾ ਅਰਥ ਕਿਵੇਂ ਕਰ ਲਿਆ ਬਰਾਬਰ ਕਿਵੇਂ ਕਰ ਲਿਆ ਉਹ ਪੰਕਤੀ ਇੱਥੇ ਗਈ ਸੀ ਗਉ ਭੈਸ ਮੰਗੂ ਲਾਵੇਰੀ ਇਕ ਤਾਜਣ ਤੁਰੀ ਚੰਗੇਰੀ ਕਰ ਕੀ ਗੀਣ ਚੰਗੀ ਮੰਗੀ ਉਹ ਕਹਾ ਤੇ ਰਬੜੀ ਮਸਤੋਨੀ ਹੈ ਮਸਤੋਨੀ ਗੀਂਤੀ ਹੈ ਇਹਨੂੰ ਕੱਢ ਕੇ ਦਿਖਾਓ ਕਿਹੜਾ ਕੱਢ ਦੂਗਾ ਇਸਤਰੀ कटके ਕੇ ਦਿਖਾਓ ਇਹਨੂੰ ਕਿਹੜਾ ਕੱਟ ਦੂ ਗੁਰਬਾਨੀ ਜੋ ਇਹਦੇ ਘਰਵਾਰਸ ਕੀ ਬਣਦੇ ਨੇ ਜਿਹਹ ਜਿਹਾਂ है। ਨੇ ਉਹਦੇ ਵਸਤਾਂ ਦੇ दे ਹੈ ਧਨਦਾਰਾ ਸੰਪਤੀ ਸਗਲ ਸੰਤਾਨਦਾਰਾ ਸੰਪਤੀ ਸਗਲ ਸੰਪਤੀ ਦੇ ਵਿੱਚ ਆ ਗਈ ਧਨ ਦੇ ਵਿੱਚ ਨਾਣਕ ਬਿਨ ਭਗਵਾਨ ਉਹ ਇਹਦੇ ਵਿੱਚ ਕਿਛ ਤੇਰੋ ਨਹੀਂ ਤੇਰੋ ਘਰੋ ਜਾਂ ਸੰਗੀ ਘਰੋ ਭਗਵਾਨ ਦੇ ਬਿਨ ਕੁਛ ਵੀ ਤੇਰਾ ਨਹੀਂ ਹੈ ਉਹ ਛੱਡਿਆ ਹੋਇਆ ਸਭ ਕੁਝ ਆਪਣਾ ਆਰਾਮ ਪਾਇਆ ਇਹ ਵਿਦਵਾਨਾਂ ਦੀ ਗੱਲ ਹੈ ਇਹ ਕਿੱਥੋਂ ਸ਼ੁਰੂ ਹੋਇਆ ਵਰੇ ਦੇ ਦੇ ਦੀ ਸ਼ੁਰੂ ਹੋਇਆ ਜਾਂ ਜਵਾਲਾ ਦੇ دماغ ਵਿਚਾਈ ਗੱਲ ਵੀ ਇੰਦਰਾ ਮੇਰੇ ਮੁੰਡਾ ਤਾਂ ਹੈ ਨਹੀਂ ਇੰਦਰਾ ਨੂੰ ਦੇ ਰਹਾ ਅਜ ਉਹ ਇਹ ਰਹਾ ਤਾਂ ਵੀ ਔਰਤਾਂ ਨੂੰ ਕੁੜੀਆਂ ਨੂੰ ਮੁੰਡਿਆਂ ਦਾ ਹਿੱਸਾ ਬਰਾਬਰ ਚਾਹੀਦਾ 1957 ਦੇ 56 ਦੇ ਵਿੱਚ ਇਹ ਬਣਾਤਾ ਜ਼ਮੀਨ ਬਰਾਬਰ ਦਾ 57 ਚ ਉਹ ਤੋਂ ਪਹਿਲਾਂ ਕੀ ਸੀ ਬਾਕੀ ਸੂਬਿਆਂ ਨੇ ਨਹੀਂ ਮੰਨਿਆ ਕੱਲੇ ਪ੍ਰਤਾਪ ਸਿੰਘ ਘਰੋਲੇ ਬੋਲੇ 50 ਪੰਜਾਬ ਚ ਲਾਗੂ ਹੈ ਪੰਜਾਬ ਹਰਲੇ ਚ ਸਿੱਧੋ ਸਾਧ ਜਿੱਨੀ ਲਾਗੂ ਹੈ ਸਾਰੇ ਇੰਡੀਆ ਜਾਇ ਜੇ ਭਾਈ ਨਾ ਹੋਵੇ ਤਾਂ ਬੈਠਦਾ ਕਬਰ ਨੂੰ ਨਹੀਂ ਉਹ ਇਹਨੇ ਹੂ ਬੂਹ ਲਾਗੂ ਕਰਤਾ ਰੋਣਾ ਭਾਤਾ ਜੀ ਸਿੱਖ ਮਤ ਕਹਿਦੀ ਹੈ ਬਰਾਬਰ ਹੈ ਇਸ ਕਰਕੇ ਅਸੀਂ ਬਰਾਬਰ ਬੋਲੋਗੇ ਉਹ ਹੀ ਕਹਿਤਾ ਵੀ ਹਾਈਲਾਈਟ ਕਰਨ ਵਾਸਤੇ ਵੀ ਅੱਜ ਦਾ ਸਾਡਾ ਧਰਮ ਜਿਹੜਾ ਇਹ ਮੂਰਖ ਦਾ ਧਰਮ ਹੈ ਵੀ ਨਵੇਂ ਯੁੱਗ ਦਾ ਜਵੇਂ ਆ ਕਹਿੰਦਾ ਸਪੋਸਰ ਨਵੇਂ ਯੁੱਗ ਦਾ ਧਰਮ ਅਦਨਕ ਅਦਨਕ ਆਦਨਕ ਧਰਮ ਇਹ ਨਵੇਂ ਯੁੱਗ ਦਾ ਧਰਮ ਹੈ ਪ੍ਰਾਣ ਯੁੱਗ ਦਾ ਕਿਹੜਾ ਸੀ ਫਿਰ ਸਾਰੇ ਯੁੱਗੇ ਧਰਮ ਦੇ ਬੜੇ ਹੋਏ ਨੇ ਇਹ ਚਾਰਾਂ ਯੁੱਗਾਂ ਦਾ ਧਰਮ ਹੈ ਪਰ ਉਹ ਮੂਰਖਾ ਨੂੰ ਕੀ ਪਤਾ ਵਿੱਚ ਨਾ ਕੀ ਹੁੰਦਾ ਸੱਚ ਤਾਂ ਪੁਰਾਣਾ ਹੁੰਦਾ ਹੀ ਨਹੀਂ ਸੱਚੇ ਤੋਂ ਦੁਨੀਆ ਪੈਦਾ ਹੋਈ ਐ ਸੱਚ ਨੇ ਸੰਸਾਰ ਪੈਦਾ ਕੀਤਾ ਸੰਸਾਰ ਨਹੀਂ ਰਹਿੰਦਾ ਸੱਚ ਰਹਿੰਦਾ ਤੂੰ ਕਹਿ ਨਾ ਹੰਦਲ ਕੁਤਰ ਇਹ ਲੀਡਰ ਨੇ ਜੁਤੀ ਸੌ ਮਾਰ ਕੇ ਇੱਕ ਵਾਰ ਇਹਨਾਂ ਨੇ ਫਿਰ ਪਤਾ ਲੱਗੂਗਾ ਜੁਤੀ ਇਹਦੇ ਕਰਨ ਗੱਲ ਆ ਕੇ ਪਤਾ ਲੱਗੂਗਾ ਵੇਰਾਂ ਦੀ ਬੋਲਤੀ ਛੇਤੀਓਂ ਬੰਦ ਹੋ ਜਾਂਦੀ ਹੁੰਦੀ ਐ ਜਿਹੜੇ ਚਮਰਟਾ ਕਹਿੰਦੇ ਸੀ ਉਹ ਕੋਣ ਸੀ ਕਾਸ਼ੀ ਦੇ ਪੰਡਤ ਸੀ ਨਾ ਇਹ ਜੇ ਵਿਦਵਾਨੇ ਸੀ ਤੇ ਚੇ ਰੋਵਦਾ ਹਰ ਰੁਪਿਆ ਅਰਪੜਾ ਚਮਾਰਾਂ ਦੇ ਘਰ ਜੰਮਿਆ ਬਦਬੂ ਆਉਂਦੀ ਆ ਉੱਥੇ ਜਿੱਥੇ ਕੰਮ ਕਰਦਾ ਇਹ ਸੀ ਨਾ ਕਹਿੰਦੇ ਗਰੀਬ ਹੈ ਡੰਗਰ ਚੱਕਦਾ ਉਹਦਾ ਚਮੜਾ ਲਾਉਂਦਾ ਉਹ ਜਿਹੜੀ ਉਹਦੀ ਅਵਸਥਾ ਸੀ ਉਹ ਕਿੱਥੋਂ ਲਿਆਉਣੀ ਫਿਰ ਕੀ ਕਹਿੰਦੇ ਸੀ ਤੇ ਡਡਾਉਤ ਕੀਤੀ ਕਿ ਨਹੀਂ ਕੀਤੀ ਵੇਪਰ ਪਰਦਾਨ ਕਰੇ ਡਡਾਉਤ ਫਿਰ ਡਡਾਉਤ ਕੀਤੀ ਉਹੀ ਲਿਖਿਆ ਹੋਇਆ ਹੈ ਸਾਡੇ ਜੇ ਚਮਰਟਾ ਲਿਖਿਆ ਹੋਇਆ ਤਾਂ ਡਡਾਉਤ ਵੀ ਕਿੱਥੇ ਲਿਖਿਆ ਹੋਇਆ ਹੈ ਨਾਮ ਦੇ ਕਹਿੰਦੇ ਨੇ ਇਹ ਪੰਡਿਆ ਉਹ ਘੋਟੇੜ ਕਹਿੰਦਾ ਹੈ ਜਿਹੜੇ ਭਗਤ ਨੇ ਉਹਨਾਂ ਨੇ ਵਿਦਵਾਨੇ ਕੁੱਟੇ ਤੇ ਗੁਰੂ ਘਰ ਦੇ ਵਿਦਵਾਨੇ ਕੁੱਟੇ ਤੇ ਜਿਹੜੇ ਐ ਬਲੋਟੀ ਸੰਤਰੇ ਦਾ ਵਿਦਵਾਨਾਂ ਦੇ ਚੇਲੇ ਹੁੰਦੇ ਨੇ ਇਹ ਨਹੀਂ ਵਿਚਾਰੇ ਵੀ ਹੁੰਦੇ ਇਹ ਤਾਂ ਵਿਦਵਾਨਾਂ ਦੇ ਚੇਲੇ ਨੇ ਸਾਖੀਆਂ ਜਿਹੜੀ ਪੜਦੇ ਨੇ ਤੁਹਾਨੂੰ ਸੁਣਾ ਦਿੰਦੇ ਨੇ ਇਹਨਾਂ ਦੇ ਕੋਲ ਤਾਂ ਕੁਝ ਹੁੰਦਾ ਹੀ ਨਹੀਂ ਜੋ ਲਿਖਿਆ ਹੋਇਆ ਹੈ ਕਹਾਣੀਆਂ ਨੇ ਸਾਖੀਆਂ ਨੇ ਇਹਨਾਂ ਨੇ ਪੜ ਲੀਆਂ ਪੜ ਕੇ ਤੁਹਾਨੂੰ ਸੁਣਾਤੀਆਂ ਉਹ ਕਿੱਠੀ ਹੈ ਕੋਈ ਪੜਿਆ ਨੂੰ ਤੁਸੀਂ ਫੜਾਤੀ ਲੈ ਬਈ ਸਾਨੂੰ ਪਿੱਠੀ-ਪਿੱਠੀ ਸੁਣਾ ਦੇ ਜੋ ਲਿਖਿਆ ਹੋਇਆ ਹੋ ਪੜ੍ਹ ਕੇ ਸੁਣਾਤਾ ਹੋਵੇ ਉਹਦੇ ਉਹਨੇ ਆਪਣੇ ਬੱਲੇ ਤਾਂ ਕੁਝ ਨਹੀਂ ਕਿਹਾ ਆਪਣੇ ਬੱਲੇ ਤਾਂ ਕੁਝ ਨਹੀਂ ਕਹਿੰਦੇ ਹਾਂ ਇਹਨਾਂ ਦਾ ਜਿਹੜਾ ਜਿਹੜਾ ਪਰਪੰਚ ਹੈ ਇੱਕ ਐਸਾ ਪਰਪੰਚ ਜ਼ਰੂਰ ਬਣਾ ਲੈ ਵਿਦਵਾਨਾਂ ਨਾਲੋਂ ਵੱਖਰਾ ਇਹਨਾਂ ਦੀ ਪੂਜਾ ਹੋਣ ਲੱਗ ਜਾਂਦੀ ਡੇਰਾ ਜਾਂ ਬਣਾ ਲੈ ਉਪਰ ਪਰਪੰਚ ਹੈ ਨਾ ਬਾਕੀ ਇਹਨਾਂ ਨੂੰ ਗਿਆਨ ਨਹੀਂ ਹੁੰਦਾ ਗਿਆਨ ਜਿਹੜਾ ਗ੍ਰੰਥਾਂ ਵਿੱਚ ਵਿਦਵਾਨਾਂ ਨੇ ਦਿੱਤਾ ਹੈ ਉਹੀ ਹੁੰਦਾ ਨਵਾਂ ਕੁਝ ਨਹੀਂ ਹੁੰਦਾ ਨਵਾਂ ਜੇ ਨਵੀਂ ਹਮੇਸ਼ਾ ਚੀਜ਼ ਖੋਚ ਵਰਦੀ ਹੈ ਚਾਹੇ ਖੋਸ ਉਤਸਾਰੀ ਹੋਵੇ ਚਾਹੇ ਕੋਈ ਨਰਾਕਾਰੀ ਹੋਵੇ ਜੇ ਨਰਾਕਾਰੀ ਰੁੱਲ ਜਾਂਦਾ ਹੈ ਨਰਾਕਾਰ ਜਾਂਦਾ ਸੰਸਾਰ 'ਚ ਨਰਾਕਾਰ ਹੈ ਆਤਮਾ ਨਰਾਕਾਰ ਹੈ ਮਨ ਨਿਰਗਾਹ ਰਿਆ ਨਾ ਚਿੱਤ ਨਿਰਗਾਹ ਰਿਆ ਨਾ ਕੱਪੜੇ ਨਿਰਗਾਹ ਰਿਆ ਨਾ ਮੈਨੂੰ ਦਿਖਾਓ ਕੱਪੜਾ ਦਾ ਕੋਈ ਰਕਸ਼ਾ ਬਣਾ ਕੇ ਤੇ ਕਵੜ ਦੀ ਫੋਟੋ ਲੈ ਕੇ ਦਿਖਾਓ ਕੋਈ ਬੰਦੇ ਦੇ ਅੰਦਰ ਕੱਪੜੇ ਦੀ ਫੋਟੋ ਲੈ ਕੇ ਦਿਖਾਓ ਇਹ ਆ ਹੈ ਭਾਈ ਉਹ ਰੰਗ ਦਿਖਾਓ ਕਹੇ ਜਾ ਕੇ ਦਿਖਾਓ ਵੇ ਦੀ ਫੋਟੋ ਬਣਾ ਕੇ ਦਿਖਾਓ ਨਾ ਗੁਣਾ ਦੀ ਨਾ ਗੁਣਾ ਦੀ ਇਹ ਦੇ ਰਾਕਾਰ ਦੀ ਦੁਨੀਆ ਦੇ ਖੇਡਾ ਗੋੜਾ ਰੋਗੜੂ ਗੋੜਾ ਰੋਗੜੂ ਦੀ ਲੜਾਈ ਆ ਅੰਦਰਲੀ ਲੜਾਈ ਆ ਬਾਹਰਲੀ ਤਾਂ ਹੀ ਨਹੀਂ ਹਾਂ ਅੰਦਰਲੀ ਲੜਾਈ ਬਾਹਰ ਆ ਜਾਂਦੀ ਹੈ ਲੜਾਈ ਅੰਦਰੋਂ ਸ਼ੁਰੂ ਹੁੰਦੀ ਹੈ ਕੋ ਸਰਮੋਸਰ ਪਰ ਅੰਦਰ ਹੀ ਹਰੂ ਹੁੰਦੀ ਹੈ ਘਰ ਚ ਫਿਰ ਬਾਹਰ भी आ ਜਾਂਦੀ ਹੈ ਪੰਚਾਇਤ ਚਲੀ ਜਾਂਦੀ ਹੈ ਜੇ ਘਰ ਚ ਨਾ ਸੁਣ ਕੇ ਲੜਾਈ ਜੇ ਤਾਂ ਘਰ ਚ ਮੁੱਕ ਜਵੇ ਜੇ ਦੀ ਵਕਾਲ ਹੋਵੇ ਘਰ है ਫਿਰ ਤਾਂ ਠੀਕ ਹੈ ਨਹੀਂ ਤਾਂ ਫਿਰ ਬਾਹਰ ਚਲੀ ਜਾਂਦੀ ਹੈ ਇਸ ਕਰਕੇ ਲੜਾਈ ਤਾਂ ਅੰਦਰ ਹੀ ਆ ਇਹਨੇ ਬੁਖਾਲਿਆ ਉਹਦਾ ਬਾਹਰ ਕੋਈ ਝਗੜਾ ਨਹੀਂ ਜੀਨੇ ਬੁਖਾਇਆ ਉਹਦਾ ਬਾਹਰ ਝਗੜਾ ਕੋਕਾ ਝਗੜਾ ਬਣਾਉਣ ਵਾਲੇ ਫਿਰ ਜਾਂਦੇ ਕਿਹਦੇ ਕੋਲ ਝਗੜਾ ਬਣਾਉਣ ਪੜਨ ਤੁਲਾ ਕੋ ਉਹ ਹੋਰ ਬਹੁਤ ਬੱਲੇ ਪੰਚਤਾ ਹੋਰ ਪੌੜੇ ਵਾਲੇ ਨੇ ਜੇ ਜਾਂਦੇ ਨੇ ਝਗੜਾ ਜਿਹੜਾ ਬਟਾਉਣ ਵਾਲਾ ਉਹਦੇ ਕੋਲ ਉਹ ਕਹਿੰਦੇ ਆਪਣੇ ਅੰਦਰੋਂ ਬਟਾਲਾ ਬਾਹਰ ਆਪੇ ਬੁੱਕ ਜੂ ਉਹ ਨਹੀਂ ਕਹਿੰਦਾ ਬਾਹਰ ਬੁਕਾਓ ਕਹਿੰਦਾ ਬਾਹਰ ਨਹੀਂ ਕੁੱਕਣਾ ਤੂੰ ਆਪਣੇ ਤਰ੍ਹਾਂ ਬਗਾ ਤੋ ਬਕਾਲਾ ਨਾ ਕੋਈ ਬਾਹਰੀ ਨਾ ਹੈ ਬਗਨ ਸਗਲ ਸੰਗ ਕੋ ਬਗਣੀ ਤੂੰ ਆਪਣਾ ਮਕਾ ਬਾਹਰ ਨਹੀਂ ਮੁਕੜ ਜਿਹਨੇ ਬਾਹਰ ਮਕਾਇਆ ਉਹਦਾ ਅੰਦਰੋਂ ਨਹੀਂ ਮੁਕਿਆ ਜਿਹਨੇ ਅੰਦਰੋਂ ਮਕਾਇਆ ਉਹਦਾ ਅੰਦਰ ਬਾਹਰ ਦੋ ਜਗ੍ਹਾ ਤੇ ਮੁਕਿਆ ਵਾਰੋ ਘੜ ਬਕਾ ਦੂਗਾ ਵਾਰੋ ਬਕਾਉਣ ਦੀ ਗੱਲ ਕਰਦੇ ਨੇ ਹੋਰ ਆਪ ਜੇ ਖਬਰ ਦੇ ਨੇ 200 ਰੁਪਏ ਰੋੜ ਦੀ ਗੱਲ ਕਰਦੇ ਨੇ ਗੁਰਖ ਝਗੜਾ ਬੁੱਕਲੋ ਹੀ ਸਿੱਖੀ ਹੈ ਇੱਥੇ ਆਪਣੀ ਮਰਜ਼ੀ ਔਰ ਪਰਮੇਸ਼ਰ ਦੀ ਮਰਜ਼ੀ ਦਾ ਝਗੜਾ ਹੈ ਝਗੜਾ ਕੀ ਹੈ ਵੇਰੀ ਮਰਜ਼ੀ ਪਰਮੇਸ਼ਰ ਦੀ ਮਰਜ਼ੀ ਦਾ ਝਗੜਾ ਸੰਸਾਰ ਚੱਲੂ ਪਰਮੇਸ਼ਰ ਦੀ ਮਰਜ਼ੀ ਲੋ ਜੇ ਮੇਰੀ ਮਰਜ਼ੀ ਹੈ ਉੱਥੇ ਝਗੜਾ ਮੈਂ ਚਾਹ ਰਾਂ ਚੰਗਾ ਨਹੀਂ ਹੋਇਆ ਐ ਹੋਣਾ ਚਾਹੀਦਾ ਸੀ ਇਹ ਐ ਕਰਕੇ ਕਰਦੇ ਆਪਾਂ ਦੇ ਬਜਨਾ ਜਿਹੜਾ ਬੈਠ ਚੁੱਕਿਆ ਉਹਨਾਂ ਚੜੇ ਦੁੱਖਾ ਜੇ ਉਹ ਕਹਿੰਦਾ ਵੀ ਜੋ ਕਰਦਾ ਹੈ ਉਹ ਠੀਕ ਕਰਦਾ ਹੈ ਉਹੀ ਫਾਇਦਾ ਚਾ ਜਿਹੜਾ ਮੈਂ ਸੋਚਿਆ ਸੀ ਨਾ ਜਿਹੜਾ ਆਪਾਂ ਸੋਚਿਆ ਸੀ ਉਹੀ ਸੀ ਫਾਇਦੇ ਚ ਆ ਜਿਹੜਾ ਹੋ ਗਿਆ ਫਾਇਦੇ ਚ ਆਪਰੇ ਆਪਾਂ ਬੇਸਮਝੀ ਨਾਲ ਆਪਣੇ ਕਹਦੇ ਆ ਵੀ ਆਪਣੇ ਫਾਇਦੇ ਚ बस, ਬਸ ਉਧਰ ਝਗੜਾ ਫੁਕ ਜਾਊਗਾ। पहले अंदरों कोई ख्याल ਕੋਈ भी सी, ਵੀ ਸੀ। ਕਿ ਠੀਕ ਨਹੀਂ ਹੋਇਆ। ਕਹ ਇਹੀ ਠੀਕ ਹੋਇਆ। ਜੇ ਪਿੱਛੇ ਆਤਵਾਦ ਦਾ ਨਾ ਪਹਿਨ ਹੁੰਦਾ ਸਿੱਖਾਂ ਗੱਦਾਰ ਗੱਦਾਰ ਕਿੱਡੇ ਗੱਦਾਰ ਨੇ ਕੀ ਹੁੰਦਾ ਜਿਹੜਾ ਨਕਸ਼ਾ ਤੁਹਾਡੇ ਸਾਹਮਣੇ ਆਉਣਾ ਹੀ ਨਹੀਂ ਸੀ ਆ ਸਾਨੂੰ ਅਗਲਾ ਕੀ ਦੋ ਕੁ ਦਸਾਲ ਹੀ ਆ ਤਨ ਲੇਡੀਜ਼ ਇਹੋ ਜਿਹੀ ਹੈ ਸਾਰੀ ਦੁਨੀਆ ਚ ਹੱਤ ਬਾਦ ਪੈਦਾ ਹੋ ਜਾਵੇ ਚਾਹੇ ਸਿੱਖੀ ਚ ਹੱਤ ਬਾਦ ਹੋਣੀ ਪੈਦਾ ਹੋ ਸਕਦਾ ਉਹ ਮਰਜੀ ਬਣਾ ਕੇ ਦਿਖਾਉਣ ਉਹ ਬਣਾ ਕੇ ਤੁਸੀਂ ਪਹਿਲਾਂ ਬਣੋ ਆਪਣੇ ਬੁੱਢਿਆਂ ਨੂੰ ਕਹੋ ਫਿਰ ਅਸੀਂ ਹੋਵੇ ਦੇਖਦੇ ਕੋਈ ਲੱਭੀ ਜਲ ਗਈ ਠੱਗ ਇੱਕ ਵਾਰੀ ਜਲਦੀ ਹੁੰਦੀ ਹੈ ਜਿਹੜੀ ਗੱਲ ਅਸੀਂ ਬਹੁਤ ਦੇਰ ਪਹਿਲਾਂ ਜਾਣਦੇ ਸੀ ਜਦੋਂ ਇਹਨਾਂ ਨੇ ਰਾਜ ਕਰੇਗਾ ਖਾਲਸਾ ਦਾ ਜਨਾਰਾ ਲਾਇਆ ਜਦੋਂ ਤੋਂ ਜਿਹੜੇ ਗੱਲ ਜਾਣਦੇ ਸੀ ਹਾਸ਼ੀਏ ਤੇ ਚਲੇ ਗਏ ਸੀ ਜਿਹੜੇ ਗੁਰਬਖ ਉਹਨਾਂ ਨੂੰ ਬੋਲਣ ਦਾ ਮੌਕਾ ਹੋਣਾ ਹੈ ਬੋਲਾਰੇ ਚੁੱਪ ਕਰਾਉਂਦੇ ਰਹੇ ਨੇ ਜਿਹੜਾ ਬੋਲਦਾ ਰਿਹਾ ਵਿੱਚੋ ਬੋਲਾਂ ਚੁੱਪ ਬੋਲਣ ਦੀ ਕੋਈ ਉਸ ਬਾਰੇ ਬੋਲਣਾ ਅਸਰ ਉਲਟਾ ਪੈਣਾ ਸੀ ਬਾਣਾ ਬੰਦੋ ਬੋਲਣਾ ਨਹੀਂ ਸੰਗਤ ਇਹਨਾਂ ਦੇ ਨਾਲ ਹੈ ਸੰਗਤ ਕਹਿੰਦੇ ਕਦੇ ਬੋਲਦੇ ਅਸਰ ਨਹੀਂ ਕੀਤਾ ਸੰਗਤ ਤਜਰਬੇ ਦਾ ਅਸਰ ਕਰਦੀ ਹੈ ਬੱਚਿਆਂ ਨੂੰ ਜਨਰਲ ਫਰਜੀ ਸਮਝਾਈ ਜਾਓ ਤੁਸੀਂ ਸ਼ਰਾਦਾਂ ਕਰਤਲੀ ਹਟਦਾ ਜਾਂ ਡਿੱਗਦਾ ਨਾ ਫੇਰ ਸਵਾਰ ਹੁੰਦਾ ਜਿਹਨਾਂ ਜੱ ਸੱਟਾਂ ਖਾ ਨਹੀਂ ਲੈਂਦਾ ਨੁਕਸਾਨ ਕਰ ਨਹੀਂ ਲੈਂਦਾ ਉਹ ਜਿਹੜਾ ਅਕਲ ਆਉਦੀ ਨਹੀਂ ਹਰ ਨੁਕਸਾਨ ਦੇ ਵਿੱਚ ਗਿਆਨ ਉਹ ਮੁਸਲਮਾਨ ਹੈ ਗੱਲ ਸਮਝਦੇ ਨੇ ਮੁਸਲਮਾਨਾਂ ਨਾਲ ਗੱਲ ਹੁੰਦੀ ਸੀ ਕਹਿੰਦੇ ਅਕਲ ਨੁਕਸਾਨ ਤੇ ਬਿਨਾ ਫਰੀ ਦੀ ਅਕਲ ਦੀ ਕਦਰ ਨਹੀਂ ਹੁੰਦੀ ਬਹੁਤ ਵੱਡੀ ਗੱਲ ਹੈ ਜਿਹੜੀ ਆ ਤਾਂ ਤੁਹਾਨੂੰ ਮੁਫਤ ਮਿਲਦੀ ਹੈ ਨਾ ਉਹਦੀ ਕਦਰ ਨਹੀਂ ਕਰਦਾ ਸੰਸਾਰ ਜਿਹੜੀ ਅਕਲ ਵੱਡੇ ਲੋਕਾਂ ਤੋਂ ਮਿਲਦੀ ਉਹ ਬੇਸ਼ੱਕ ਲਈ ਯਾਦ ਰੱਖ ਲਿਓ ਉਹ ਕਲ ਯਾਦ ਰੱਖੀ ਉਹ ਸਾਡਾ ਲੋਭ ਸੀ ਜਿਹਦਾ ਇਹਨਾਂ ਨੇ ਫਾਇਦਾ ਉਠਾਇਆ ਨੀਡਰ ਨੇ ਸੰਸਾਰ ਦਾ ਤਾਂ ਲੋਭ ਹੈ ਈਦਾ ਫਾਇਦਾ ਉਠਾ ਰਹੇ ਨੇ ਤਰੂ ਦੌਰ ਵੀ ਇਹ ਕਿ ਲੋ ਚੌੜ ਦਬੋਗੇ ਤਰੂ ਆਹ ਦਬੋਗੇ ਤਰੂ ਉਹ ਦਬੋਗੇ ਬਿਜਲੀ ਖਸੀ ਨਾ ਲੋਬੀ ਨੇ ਲੋਕ ਲੋਭ ਛੱਡਣ ਦੀ ਗੱਲ ਹੀ ਕਰਨਗੇ ਲੋਭ ਦਾ ਫਾਇਦਾ ਉਠਾ ਕੇ ਲੀਡਰ ਬਣ ਵੀ ਗਏ ਐਕਾਉਂਟ ਹੈ ਲੀਡਰ ਨੇ ਇਹ ਲੀਡਰ ਨੇ ਸਾਰੇ ਹੀ ਇਹ ਤੁਹਾਡੀ ਕਮਜ਼ੋਰੀ ਦਾ ਫਾਇਦਾ ਹੋ ਰਿਹਾ ਕਮਜ਼ੋਰੀ ਕੱਢਣ ਵਾਲਾ ਲੀਡਰ ਹੁੰਦਾ ਹੈ ਬਿਮਾਰੀ ਦੂਰ ਕਰਨ ਵਾਲਾ ਲੀਡਰ ਹੁੰਦਾ ਬਿਮਾਰੀ ਤੋਂ ਫਾਇਦਾ ਡਾਕਟਰ ਹੈ ਬਿਮਾਰੀ ਹਟਾ ਰਿਹਾ ਬਿਮਾਰੀ ਵਧਾ ਰਿਹਾ ਪੈਸੇ ਵਧਾ ਰਿਹਾ ਇਹਦਾ ਮੀਟਰ ਚੱਲ ਰਿਹਾ ਐਸੇ ਵੀ ਡਾਕਟਰ ਨੇ ਆ ਥੋੜੀ ਡਾਊਨ ਕਰ ਫਿਰ ਉਲਟੀ ਦਵਾਈ ਦੇ ਵਾਰੀ ਕੋਈ ਨਹੀਂ ਵਧਾ ਰਿਹਾ ਇਹ ਲੀਡਰ ਸਾਰੇ ਜਿਹੜੇ ਨੇ ਇਹ ਬਾਇਆਧਾਰੀ ਨੇ ਜਿੱਦਣ ਤੁਸੀਂ ਇਹਨਾਂ ਨੂੰ ਵਿਦਵਾਨਾਂ ਨੂੰ ਸਾਰੇ ਵਿਦਵਾਨੇ ਨੇ ਗੁਰੂ ਕੋਈ ਨੀ ਹੈ ਨਾ ਕਿ ਗਰਮ ਪੁਨਾਰੇ ਲੱਗੇ ਬੈਠੇ ਖਾਸੀਅਤਾਂ ਤਾਂ ਇਹ ਰਾਜ ਨਹੀਂ ਕਰਦੇ ਉੱਤੇ ਗੁਰੂ ਨੇ ਗੁਰੂ ਕਿਹਨੇ ਲੋਬੀਆਂ ਦਾ ਲੀਡਰ ਬਣਨਾ ਮੂਰਖਤਾਈ ਹੈ ਬੇਈਮਾਨਾ ਦਾ ਲੀਡਰ ਬਣਨਾ ਤਾਂ ਬੇਈਮਾਨ ਹੈ ਬਣਨਾ ਬਹੁਤ ਆਲੂ ਇਹਨਾਂ ਦੀ ਲੋਭ ਦੀ ਭੁੱਖ ਦੀ ਪੂਰਤੀ ਆ ਫਰਮੇਸ਼ਾਹ ਦੀ ਕਰ ਸਕਦਾ ਤੁਸੀਂ ਕਿਵੇਂ ਕਰ ਦੋਗੇ ਫਰਾਡ ਹੈ ਸਾਰਾ ਹੈ ਫਰਾਡ ਕਰਨ ਨੂੰ ਯੋਦਾ ਕੋਰ ਆਪਣੇ ਖੂਜੇ ਲੱਗ ਜਾਂਦੇ ਨੇ ਉਹਨੇ ਕਰਨਾ ਹੀ ਨਹੀਂ ਸੱਚ ਬੋਲਣਾ ਸੱਚ ਫਿੱਟਦੀ ਹੈ ਸੰਸਾਰ ਨੂੰ ਫਿੱਟ ਨਹੀਂ ਸੱਚ ਸੱਚ ਕਿੱਥੇ ਫਿੱਟ ਹੈ ਬੱਬੇ ਬਾਜੀ ਆ ਉਹਦੀ ਸਾਰੀ ਸਭ ਕੁਝ ਉਹਦੀੋ ਬਾਜੀ ਹੈ چلਦੀ ਹੈ ਜੋ ਸੰਸਾਰ ਚੱਲਦਾ ਹੈ ਬੇਈਮਾਨ ਵੀ ਉਹਨੇ ਬਣਾਏ ਨੇ ਲੀਡਰ ਵੀ ਬਣਾਏ ਨੇ ਤੁਹਾਨੂੰ ਗਿਆਨ ਦੇਣ ਵਾਸਤੇ ਬਣਾਏ ਨੇ ਉਹਨੇ ਬਣਾਏ ਨੇ ਉਹਦੇ ਹੁਕਮ ਚੋ ਰਿਹਾ ਜੋ ਹੋ ਰਿਹਾ ਹੈ ਕਰਕੇ ਗੁਰਮੁਖ ਬਾਣਾ ਬਣਦੇ ਨੇ ਵੀ ਉਹਦਾ ਹੁਕਮ ਹੈ ਇਹਨਾਂ ਨੂੰ ਅਕਲ ਰਹੀ ਆਪੋ ਸ਼ਰੀਕ ਨਹੀਂ ਹੁੰਦੇ ਪੈੜੇ ਕਬੂਜ ਆਪ ਪਰੇ ਰਹਦੇ ਨੇ ਆਪ ਨਹੀਂ ਹੁੰਦੇ ਫਰਮੇਸ਼ਨ ਨੂੰ ਕਹਿੰਦੇ ਵੇ ਇਸ ਕੰਮ ਤੇ ਮੈਨੂੰ ਤਾਂ ਬਚਾ ਕੇ ਰੱਖ ਤੂੰ ਹੋਰ ਬਖੜੇ ਰਹੋ ਉਹਦੇ ਕੋ ਉਹਦਾ ਤਨੂਹੇ ਤਾਂ ਕਹ ਦੁੱਤੇ ਦੀ ਬੰਦੇ ਨੇ ਪੀੜੇ ਦੀ ਖਿੜਕੀ ਤੇ ਉਹ ਕਹਿੰਦਾ ਮੈਨੂੰ ਦੇ ਤੇ ਕੁਰਸੀ ਸਾਡੇ ਘੜੇ ਤੂੰ ਉਹ ਤਾਂ ਨਾਲੇ ਕੋਈ ਬੰਦਾ ਨਾ ਬੜੇ ਤਾਂ ਉਹਦਾ ਰੋਡ ਬਵੇ ਸਾਟੀ ਖੰਡਾੜਾ ਰਸਤਾ ਥੁਲਾ ਕੋਈ ਹੈ ਹੀ ਨਹੀਂ ਕੋਈ ਜਾਂਦਾ ਹੀ ਨਹੀਂ ਉਹ ਆਪਣੇ ਮੇੜੇ ਦੇ ਪਾਸੇ ਰਹਿੰਦੇ ਨੇ ਜਿਹੜੇ ਰਸਤੇ ਕੋਈ ਚੱਲੇ ਨਾ ਉੱਤੇ ਚੱਲਦੇ ਨੇ ਉਹ ਪੀੜੇ ਨਹੀਂ ਉੱਥੇ ਜਿਹੜੀ ਜਿਹੜੇ ਰਸਤੇ VIP ਹੁੰਦੇ ਨੇ ਅਜਾਣਾ ਹੁੰਦਾ ਰਸਤਾ ਸਾਦੇ ਬੰਦ ਕਰ ਦਿੰਦੇ ਪੀੜਾ ਡਾ ਦਿੰਦੇ ਰਸਤਾ ਬੰਦ ਕਰਤਾ ਸੱਚਖੰਡ ਦਾ ਰਸਤਾ ਹੀ ਬੰਦਾ ਵੀਆਈਪੀ ਜਾਣ ਵਾਲਾ ਰਸਤਾ ਹੈ ਉਹ ਥੋੜੇ ਹੀ ਬੰਦੇ ਹੁੰਦੇ ਨੇ ਜਾਣ ਵਾਲੇ ਉਹ ਰਸਤੇ ਜਾਂਦਾ ਹੀ ਨਹੀਂ ਕੋਈ ਉਹਨਾਂ ਨੂੰ ਉੱਤੇ ਖਤਰਾ ਕੋਈ ਨਹੀਂ ਜਿਹੜਾ ਉੱਤੇ ਐਕਸੀਡੈਂਟ ਹੋਣ ਜਾ ਹੈ ਹੀ ਨਹੀਂ ਕੋਈ ਜਿਹੜੇ ਵੀਆਈਪੀ ਨੇ ਸੱਚਖੰਡ ਵਾਲਿਆਂ ਨੇ ਉਹ ਰਸਤੇ ਕੋਈ ਜਾਂਦਾ ਹੀ ਨਹੀਂ ਹੋਰ ਉਹੀ ਜਾਂਦੇ ਨੇ ਉਹਨਾਂ ਦਾ ਆਪ ਸੂਜੀ ਕੋ ਟਕਰਾਉ ਹੋਈ ਨਹੀਂ ਹੁੰਦਾ ਕਿਸੇ ਨਾਲ ਸਭ ਖੇਡੋਦੀ ਹੈ ਚੋਪੜ ਕੀਤੇ ਚਾਰ ਚੋਪਟਾ ਚਾਰ ਯੁਗਾਂ ਦੇ ਵਿੱਚ ਕਦੇ ਕਿਹਾ ਜਾ ਟਾਈਮ ਲਿਆ ਦਿੰਦਾ ਕਦੇ ਕਿਹਾ ਜਾ ਲਿਆ ਦਿੰਦਾ ਇਹਦੇ ਨਾਲ ਵੀ ਗਿਆਨ ਵੱਧਦਾ ਦੁਨੀਆ ਦਾ ਗੁਰੂ ਆਵਰਦਾ ਕਿ ਆਖਰ ਉਹਨੇ ਪਿੱਛਾ ਸਭ ਕੁਝ ਕਰਨ ਦਾ ਪਿੱਛੇ ਮਤਲਬ ਗਿਆਨ ਦੇਣਾ ਲੋਕਾਂ ਨੂੰ ਅਕਲ ਵਾਲੇ ਬਣਾਉਣਾ ਫਿਰ ਕੌਣ ਨਹੀਂ ਪਛਾਣਦਾ ਇਹਨਾਂ ਨੂੰ ਲੋਕਾਂ ਨੂੰ ਕਿਉਂ ਬਦਲ ਦਿੰਦੇ ਨੇ ਥੋੜਾ ਜਿਹਾ ਦਰਵਾਜ਼ੇ ਸਮਝ ਆ ਰਹੀ ਹੈ ਲੋਕਾਂ ਨੂੰ ਝੂੜ ਦੀ ਸਮਝ ਹੜੀ ਹੜੀ ਆ ਰਹੀ ਹੈ ਲੋਕਾਂ ਦਾ ਗਿਆਨ ਵੱਧ ਰਿਹਾ ਹੈ ਇਹ ਵੱਧਦਾ ਵੱਧਦਾ ਵੱਧਦਾ ਵੱਧ ਅੱਜ ਉਹ ਸਟੇਜ ਆ ਗਈ ਜਿਹੜੇ ਗਿਆਨ ਤੇ ਇੱਕਦਮ Hindu aur Musalman ਖਿਲਾਫ ਖੜੇ ਹੋ ਗਏ ਸੀ ਜੋਗੀ ਵੀ ਨਾਲ ਸੀ ਸਾਰੇ ਧਰਮ ਉਸਤ ਖੜੇ ਹੋ ਗਏ ਸੀ ਭਗਤਾਂ ਵੇਲੇ ਅੱਜ ਤੋਂ ਢਾਈ ਕਿ ਸੌ ਸਾਲ ਪਹਿਲਾਂ 300 ਸਾਲ ਪਹਿਲਾਂ ਦਸਮ ਬਾਸ਼ਾ ਵੇਲੇ ਆ ਜੋ ਉਸ ਗਿਆਨ ਨੂੰ ਦੁਨੀਆ ਭੜਦੀ ਹੈ ਦੱਸੋ ਕੀ ਹੈ ਕਿਉਂਕਿ ਜਿਹੜੇ ਧਰਮਾਂ ਨਾਲ ਰਲ ਕੇ ਜਿਹੜੀਆਂ ਮਤਾਂ ਨਾਲ ਰਲ ਕੇ ਸਰਕਾਰਾਂ ਦੇ ਇਹਦਾ ਗਲ ਘੁੱਟਣਾ ਚਾਹਿਆ ਸੀ ਸੱਚ ਦਾ ਉਹ ਵਰਤਾਂ ਤੋਂ ਅੱਜ ਦੁਨੀਆ ਦੁਖੀ ਹੈ ਅੱਜ ਅਤਵਾਦ ਉਹੀ ਪੈਦਾ ਕਰਦੀ ਹੈ ਸਰਕਾਰਾਂ ਨਾਲ ਜੋ ਉਹਨਾਂ ਦਾ ਟਕਰਾਅ ਹੋ ਗਿਆ ਉਹਨਾਂ ਨਹੀਂ ਆਖਣ ਸਰਕਾਰਾਂ ਬਰਨੀ ਸਕਦੀਆਂ ਅੱਜ ਅੱਜ ਦੀ ਡੇਢ ਜਿਹੜਾ ਉਹ ਚੱਲਦੇ ਰਹੇ ਉਹ ਮੰਨ ਨਹੀਂ ਸਕਦੀਆਂ ਸਰਕਾਰ ਉਹ ਕਹਿੰਦੇ ਨੇ ਸਾਡਾ ਧਰਮ ਜਿਹੜਾ ਕਹਿੰਦਾ ਉਹ ਉਵੇਂ ਕਰੋ ਆਪਣੇ ਫਤਵੇ ਲਾਗੂ ਕਰਾਉਂਦੇ ਨੇ ਉਹ ਹੁਣ ਪਾਣੀ ਬਹੁਤ ਲੰਗ ਚੁੱਕਿਆ ਸੰਸਾਰ ਅਖਲਾळा ਹੋ ਗਿਆ ਉਹ ਬੇਕਲੀ ਵਾਲੇ ਉਹ ਉਸ ਟਾਈਮ ਦਾ ਧਰਮ ਸੀ ਅੱਜ ਦਾ ਨਹੀਂ ਹੋਇਆ ਜੋ ਕਦਾਵਾ ਚੌਥੀ ਜਮਾਚ ਬੜੀਆਂ ਸੀ ਉਹ ਪਿੱਛੇ ਰਹਿ ਗਈ ਉਹ ਅੱਜ 10ਵੀਂ ਚਾਉਂ ਸੀ ਅੱਜ ਦਾ ਸਕੋਰ ਸੋਰ ਹੈ ਅੱਜ ਦਾ ਕੋਸ ਉਹਨੇ ਕੋ ਹੈ ਨਹੀਂ ਉਹ ਇੱਥੇ ਹੈ ਅੱਜ ਜੋ ਧਰਮ ਚਾਹੀਦਾ ਹੈ ਦੁਨੀਆਂ ਦੇ ਪੜ੍ਹੇ ਲਿਖੇ ਲੋਕਾਂ ਨੂੰ ਉਹ ਰਿਜੈਕਟਡ ਧਰਮ ਵਿੱਚ ਹੈ ਨਹੀਂ ਉਹ ਤਾਂ ਚਾਹੁੰਦੇ ਰਹੂ ਉਹ ਕਹਿੰਦੇ ਇੱਕ ਐਸਾ ਧਰਮ ਬਣਾਓ ਜੀ ਚ ਸਾਰੇ ਧਰਮਾਂ ਨੂੰ ਕੋਈ ਨਹੀਂ ਹੋਰ ਹੈ ਨਹੀਂ ਕੋਈ ਬੜੇ ਉਹ ਹੈ ਪਰ ਇਹ ਕੀ ਕਹਿੰਦਾ ਇਹਦੀ ਸਮਝ नहीं ਆਏ ਇਹਦੀ ਭਾਸ਼ਾ ਇਹਦੇ ਅਰਥ ਨਹੀਂ ਵਿਦਵਾਨਾਂ ਨੂੰ ਸਮਝ ਆ ਰਹੇ ਕਬੀਰ ਕੀ ਕਹਿ ਰਿਹਾ अपने ਬਾੜੀ ਵਿੱਚ ਵਿਦਵਾਨਾਂ ਦੀ ਸਮੀਟੇ ਬਾਹਰ ਕਹਿੰਦਾ ਸਾਨੂੰ ਨਹੀਂ ਪਤਾ ਆਪਣੇ ਯੂਨੀਵਰਸਿਟੀ ਦੇ ਵਿੱਚ ਵੀ ਇਹ ਗੱਲ ਚਰਚਾ ਦੇ ਵਿੱਚ ਕਿ ਸੰਤ ਬਾਣੀ ਸੰਤ ਬੋਲੀ ਕੋਈ ਬੋਲੀ ਹੈ ਸੰਤ ਭਾਸ਼ਾ ਇਹਨੂੰ ਸੰਤ ਭਾਸ਼ਾ ਕਹਿੰਦੇ ਰਹੋ ਗੁਰਮੁਖੀ ਭਾਸ਼ਾ ਨੂੰ ਉਹ ਦੇ ਗੁਰਬਿਰਾਂ ਕੁਰਬਾਨੀ ਦੀ ਸਮਝ ਨਹੀਂ ਹੁੰਦੀ ਇਹ ਗਲਤੀ ਚਰਚਾ ਹੈ ਕਿਸੇ ਜ਼ਮਾਨੇ 'ਚ ਉਹਨੂੰ ਬ੍ਰਹਮ ਵਿਦਿਆਥੇ ਦੇਸੀ ਹੁਣ ਵੀ ਕਹਿੰਦੇ ਜੀ ਉਹ ਬ੍ਰਹਮ ਵਿਦਿਆ ਕਹਿੰਦੇ ਨੇ ਬਾਣੀ ਬ੍ਰਹਮ ਬਾਣੀ ਕਹਿੰਦੇ ਨੇ ਉਹਨੂੰ ਸਮਝਣ ਵਾਲੀ ਜਿਹੜੀ ਵਿਦਿਆ ਹੈ ਜਿਹੜੀ ਵਿਦਿਆ ਜੋ ਲਿਖੀ ਜਾਂਦੀ ਉਹਨੂੰ ਉਹ ਵਿਦਿਆ ਕਹਿੰਦੇ ਬਾਣੀ ਬ੍ਰਹਮ ਭੇਦ ਧਰਮ ਦੇਡੋ ਕਿੱਥੋਂ ਆਈ ਹੈ ਗੱਲ ਕਿੱਥੋਂ ਆਈ ਹੈ ਜਿਹਨਾਂ ਦਾ ਲੜਿਆ ਨਾ ਮੇਤੋ ਉਹ ਬੁਰਖਣ ਉਹ ਪਿੱਛੇ ਵੀ ਸੀ ਧਰਮੇ ਦਿਸ਼ਾਹੀਨ ਕਰਤਾ ਸੀ ਕਵੀ ਨੇ ਕਿੱਥੋਂ ਲਿਆ ਸੀ ਕਬੀਰ ਨੇ ਕਿਥੋਂ ਲਿਆ ਸੀ ਉਹ ਉਹਨਾਂ ਨੇ ਕਿਥੋਂ ਲਿਆ ਸੀ ਉਦੋਂ ਪਿੱਛੋਂ ਲਿਆ ਸੀ ਉਹਨਾਂ ਨੇ ਕਿਥੋਂ ਲਿਆ ਸੀ ਉਦੋਂ ਪਿੱਛੋਂ ਆਖਰ ਆਕੇ ਬੇਦ ਇਸ ਕਰਕੇ ਅਸੰਖ ਗ੍ਰੰਥ ਮੁਖ বেদ ਪਾਠ ਗ੍ਰੰਥ ਜਿਹੜੇ বেদ ਤੋਂ ਵੱਡੇ ਹੋਏ ਨੇ ਬਾਅਦ ਸ्रोत वेद ਬੇਦਾਂ ਮੈਂ ਨਾਮ ਉਤਮ ਸੋ ਸੁੜੇ ਰਾਹੀ ਵੈਦਾਂ 'ਚ ਵੀ ਨਾਮ ਹੈ ਉੱਤਮ ਨੇ ਸੀ ਬਾਕੀ ਚੀਜ਼ਾਂ ਵੀ ਗਿਆਨ ਹੈ ਆਯੁਰਵੈਦਿਕ ਵੀ ਹੈ ਸਤ ਗਿਆਨ ਹੈ ਪਰ ਨਾਮ ਸਭ ਤੋਂ ਉੱਤਮ ਹੈ ਉਚਿਤਮ ਗਿਆਨ ਹੈ ਉੱਤਮ ਤੋਂ ਉਚਿਤਮ ਕੁਝੇ ਤੋਂ ਉੱਚਾ ਜਿਹੜਾ ਹੈ ਗਿਆਨ ਇਹ ਨਾਮ ਆਤਮ ਗਿਆਨ ਆਤਮ ਨੂੰ ਸਮਝ ਆਤਮ ਜਿਹੜੇ ਆਤਮਿਕ ਰੋਗ ਦੇ ਵੰਸ਼ਿਕ ਰੋਗ ਨੇ ਇਹਨਾਂ ਦਾ ਇਲਾਜ ਕਰਦਾ ਇਹ ਔਖਾ ਹੈ ਸ਼ਰੀਰ ਦੇ ਲੋਕ ਰੋਗਾਂ ਦਾ ਇਲਾਜ ਕਰਨਾ ਔਖਾ ਹੈ ਰੂਕਾਰ ਦਾ ਇਲਾਜ ਕਰਨਾ ਔਖਾ ਹੈ ਲੋਕਾਂ ਦਾ ਇਲਾਜ ਕਰਨਾ ਔਖਾ ਹੈ ਕਪੜਾ ਦਾ ਇਲਾਜ ਕਰਨਾ ਔਖਾ ਹੈ ਹਸਪਤਾਲ ਕੋਈ ਡਿਸਪੈਂਸਰੀ ਹੈ ਇਨਾਂ ਦੀ ਇੱਥੇ ਬੜੀ ਔਖਾ ਜਿਹੜੇ ਕਹਿੰਦੇ ਨੇ ਸਭ ਤੋਂ ਖੁਦ ਰੋਗੀ ਨੇ ਖੁਦ ਰੋਗੀ ਨੇ ਇਹੋ ਜਿਹੇ ਸਸਤਾ ਨੇ ਖੁਦ ਰੋਗੀ ਨੇ ਲੋਗਦਾਰ ਆਜ ਵੀ ਕਰਦੇ ਉਹਨਾਂ ਨੇ ਮੰਨ ਲਿਆ ਸੀ ਹੱਕਦਾਰ ਰਾਜ ਨਹੀਂ ਹੈ ਮੰਨ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਜਦ ਇੱਕੋ ਸਿਮILAR ਹੋਇਆ ਸੀ ਇੱਥੇ ਜੋਦੀ ਛਾਂਬੇ ਦੇ ਜਬਦੀ ਉੱਥੇ ਲਿਖਤਾ ਹੋਵੇ ਅਸੀਮ ਹੈ ਉਹਦੇ ਚ ਆਸੀ ਆਪੜਾ ਪ੍ਰੋਫੈਸਰ ਬੁਧੀ ਸਿੰਘ ਹੋਂਵੇਂ ਅਸੀਮ ਹੈ ਉਹ ਲੈ ਕੇ ਪ੍ਰਿੰਸੀਪਲ ਬਲੀ ਸਿੰਘ ਜੇ ਹੋਂਵੇਂ ਅਸੀਮ ਹੈ ਤੁਹਾਡੀ ਬੁੱਧੀ ਸੀਮਤ ਹੈ ਦੀਦੀ ਸੀਮਤ ਬੁੰਦੀ ਉਹਦੇ ਵਾਸਤੇ ਹੋਵੇ ਅਸੀਬ ਜਿਹੜੀ ਬੁੱਧੀ ਅਸੀਬ ਹੈ ਉਹਦੇ ਵਾਸਤੇ ਹੋਵੇ ਸੀਮਤ ਹੈ ਉਹ ਹਮੇ ਦਾ ਪੰਪਸਾਂਦਰ ਦੇ ਵਿੱਚੇ ਵਿੱਚੇ ਸੁਖਸਾਗਰ ਚੋਬੇ ਹੁੰਦੀ ਕਿੱਥੇ ਹੈ ਪੰਪਸਾਗਰ ਸੁਖਸਾਗਰ ਦੇ ਵਿੱਚ ਹੈ ਪੰਪਸਾਗਰ ਸੁਖਸਾਗਰ ਮਾ ਜੀ ਜੇ ਹਮੇ ਅਸੀਬ ਦਾ ਇਲਾਜ ਹੈ ਕੋਈ ਨਹੀਂ ਦੂਜੀ ਜਿਹਾ ਅਸੀਬ ਨਹੀਂ ਹੋ ਸਕਦੀਆਂ ਜੇ ਸੱਚ ਸੀਮਤ ਹੈ ਫਿਰ ਜੋਬੇ ਅਸੀਮ ਹੈ ਨਾਮ ਸੀਮਤ ਹੈ ਫਿਰ ਹੋਂਬੇ ਨਾਲ ਬਰੋਲ ਅਗਰ ਢਹੂ ਕੋਲ ਹਾਰ ਗਈ ਦੀ ਉਹ ਹਾਰ ਹੋਂਬੇ ਵੀ ਹੋਣੀ ਹੈ ਸੱਚ ਦੀ ਹਾਰ ਨਹੀਂ ਹੋ ਸਕਦੀ ਬੁੱਧੀ ਸੀਮਤ ਹੈ ਰੋ ਫਿਰ ਜੇ ਹੋਂਬੇ ਅਸੀਮ ਹੈ ਜਿਨ੍ਹਾਂ ਵਾਸਤੇ ਉਹਨਾਂ ਦੀ ਬੁੱਧੀ ਸੀਮਤ ਹੈ ਸੰਸਾਰੀ ਬੁੱਧੀ ਹੋ ਰੋਲ ਇਹਨਾਂ ਰੋਲ ਬੇਵਕ ਬੁੱਧੀਆ ਹੁੰਦੇ ਅਸੀਂ ਵਹੀ ਨਹੀਂ ਹੋਂ ਮੈਂ ਤਾਂ ਦੀ ਤਾਂ ਮਾਂ ਵੀ ਅਸੀਬ ਨਹੀਂ ਹੈ ਜਿੱਥੋਂ ਪੈਦਾ ਹੁੰਦਾ ਹੋਂ ਉਪਜੈ ਕਿੱਥੋਂ ਸੰਜਮ ਆਇਆ ਵੀ ਹੈ ਕੋਈ ਜਿਹਦਾ ਮਾਪਿਓ ਹੁੰਦਾ ਹੈ ਉਹ ਅਸੀਬ ਹੁੰਦਾ ਹੈ ਤੁ ਕਿੱਥੋਂ ਲੈ ਇਹਨਾਂ ਨੂੰ ਕੌਣ ਦਵੇ ਅਕਲ ਕੌਣ ਦਵੇ ਅਕਲ ਇੱਥੋਂ ਦਾ ਲੈਣੀ ਇਹਨਾਂ ਨੇ ਵੀ ਤੇ ਅਗਲਾ ਗਿਆਨ ਹੈ ਉਦੋਂ ਦਾ ਰੈਡੀ ਦੀ ਅਗਲਾ ਆ ਜਾਂਦੀ ਜੇ ਬਾਣੀ ਨੂੰ ਗੁਰੂ ਮੰਨ ਲੈਂਦੇ ਕਹਿੰਦੇ ਨੇ ਮੰਨਦੇ ਨਹੀਂ ਹਣ ਸੁਣਦੇ ਨੇ ਬਾਣੀ ਦੀ ਕਰਦੇ ਨੇ ਆਪਣੇ ਬੰਦੀ ਇਹਨਾਂ ਨੂੰ ਗੁਣਤੀ ਇਹ ਮਿਲੀ ਹੋਈ ਐ ਬਚਪਨ ਚ ਸੁਣੋ ਸਬਦੀ ਕਰੋ ਮੰਨਦੀ ਇਹ ਗੁਣਤੀ ਹੈ ਨਾ ਨੂੰ ਇਹ ਹੀ ਛੱਡਦੇ ਗੁਣਤੀ ਨੂੰ थोड़ो शब्द ही करो अपने मन दी करो मर्जी चलो जी है गुरबानी ने ये गल कह दी गुरबानी कह दी सत सत करके बोलो एरु गुरबानी नु सत्त सत करके बोलो ये उपदेश है गुरु का ये नु सत्त सत्त करके बोलो ए गुरु का उपदेश है सतगुरु का उपदेश नहीं है करते पुख ने गुरु ने सतगुरु ने भूक डाया है कह दे साडे ता लिया साडा नी है आप कर्ता हार है परमेश्वर है बुलाउने वाला असि ਤੁਸੀਂ ਦੋ ਸੱਤ-ਸੱਤ ਕਰਕੇ ਫਿਰ ਲੋ ਪਰ ਪਹਿਲੀ ਸਟੇਜ ਵਿੱਚ ਮੰਨੜੀ ਗੱਲ ਹੈ ਨਹੀਂ ਕਿ ਤਾਂ ਬਾੜੀ ਤੇ ਲਿਖਿਆ ਹੋਇਆ ਸਭ ਕੁਝ ਜਾਂ ਤਾਂ ਅਸੀਂ ਮੰਨੜੀ ਨਹੀਂ ਹੈ ਤਾਂ ਤਾਂ ਪ੍ਰਾਪਤੀ ਨਹੀਂ ਹੋਣੀ ਮੈਂ ਨਹੀਂ ਬੰਦਾ ਦੁਆਰ ਤੋਂ ਚਾਰ ਹੁੰਦੇ ਨੇ ਮੈਨੂੰ ਪੜਾ ਕੇ ਦਿਖਾਓ ਮੈਂ ਥੱਲੇ ਮਰੋ ਮੈਂ ਪੜਾ ਕੇ ਦਿਖਾਉਂ ਮੈਂ ਇਹ ਨਹੀਂ ਮੰਨਦਾ ਤੋਹਾਰ ਉਧਰ ਇੱਕੋ ਗੱਲ ਹੀ ਸਰਬੰਧਾ ਬਾਕੀ ਸਭ ਕੁਝ ਬੁੱਤ ਮਰੋ ਜਾਪੜਾ ਕੇ ਦਿਖਾਉਂ ਕੌਣ ਪੜਾਉਂਦਾ ਵੇਗਨ ਦਵਾਰ ਤੋਂ ਤੈਨੂੰ ਹੁੰਦੈ ਇਹ ਆਪਾਂ ਜੋਦਦੇ ਤੁਸੀਂ ਕਹਿੰਦੇ ਹੋ ਚਾਰ ਉਧਰ ਨੇ ਕਹੋ ਵੇਗਨ ਪੰਜ ਜੋਦਦੇ ਵੈਰੀ ਮਰਜੀ ਇਹਨਾਂ ਲੈ ਯਾ ਬੁਲੀਲੀ ਬਹਿਤਾ ਹੀ ਹੈ 1:05:24 ਹੈ ਜੀ ਬੈਰੀ ਬੰਦਾ ਸਾਰੀ ਦੁਨੀਆ ਬੋਲਦੇ ਬੋਲਦੇ ਉਹ ਸਾਰੇ ਸੱਚਖੜ ਦੇ ਬਾਣੀ ਸਾਨੂੰ ਸਭਤੀ ਰਾਈ ਹੋਈ ਹੁਕਮ ਯਾ ਤੁਸੀਂ ਨਹੀਂ ਬੰਢਣੀ ਕੱਲ ਖਾਧੂਆ ਤੇ ਪੜਨਾ ਕਿਥੋਂ ਸਿੱਖੀ ਸ਼ੁਰੂ ਕਿਥੋਂ ਹੋਣੀ ਸੀ ਖੜੋ ਤਾਂ ਸਹੀ ਕਿ ਗਲਤੀ ਖੜਜੋ ਖੜੀ ਕਿਤੇ ਨਹੀਂ ਅਸੀ ਦਾ ਇਹ ਸਾਰੀ ਖੇਡ ਪਰਮੇਸ਼ਰ ਦੀ ਹੈ दर्दा ਜੀਵ ਨੇ ਇਹ ਦਰਦਾਂ ਤੋਂ ਸਵਾ ਕੁ ਛੀਰ ਜੀ ਜਨ ਸਭ ਸਾਰੀ ਗੀਤੇ ਇਹ ਸਾਰੀ ਦੇ ਹਾਥ ਕਿਸੇ ਦੇ ਕਿਸ ਨਹੀਂ ਸਭ ਚੱਲੇ ਚਲਾਏ ਦਰਦਾਂ ਚਲਾਏ ਦੇ ਜਲਦੀ ਦਰਦ ਨੂੰ ਆਪਾ ਆਵੇ ਚਲਾਉਦੇ ਕਾਵੇ ਜਲਦੀ ਇਹ ਉਹ ਚਰਾਏ ਦੇ ਚਲਦੀਆਂ ਨੇ ਕਹਾ ਹਾਂ ਚਰਾਏ ਦੇ ਚਲਦੀਆਂ ਨੇ ਇਹ ਵੀ ਚੱਲੇ ਚਲਾਏ ਉਭਯੋਹੀ ਗੱਲ ਅਭਯੋਹੀ ਗੱਲ ਇਹ ਕੀ ਫਰਕ ਹੈ ਲੋਰ ਦੇ ਵਿੱਚ ਬੁੱ ਚਲਾਏ ਆ ਗਿਆ ਉਹ ਚਾ ਕੇ ਰੱਖਦੇ ਆ ਤਾਹੀ ਕਰ ਕਿਤੇ ਜਾਂਦੇ ਆ ਅੱਗੇ ਦੁਰਦੀਆਂ ਨੇ ਨਾ ਇਹ ਵੀ ਅਸੀਂ ਅੱਗੇ ਦੁਰਦੇ ਆ ਜਨਤਾ ਅੱਗੇ ਬਸ ਕੁਛ ਨਹੀਂ ਇਹਦਾ ਕੀ ਮਤਲਬ ਉਹ ਚੱਲੇ ਜਿਹਾ ਉਹ ਜਲੇ ਚਲਾਇ ਇਹਦਾ ਚਲਾਇ ਚਲਦੇ ਨੇ ਚੌਪੜ ਖੇਡਣ ਵਾਲਾ ਹੋ ਆ ਉਹ ਦੇਖਦਾ ਉਹਦਾ ਪੈਦਾ ਕੀਤਾ ਹੋਇਆ ਸੱਚ ਖਤਮ ਕੀਤਾ ਰਹਿਣੇ ਉਰਲੀ ਬੜਾ ਪੈਦਾ ਕਿਨੇ ਕੀਤਾ ਸੀ ਪਰਗਟੇ ਖਾਲਸਾ ਪਰਮਾਤਮਾ ਪਰਮਾਤਮਾ ਦੀ ਉਹਦੀ ਸੀ ਤਾਂ ਪਰਗਟ ਹੋਇਆ ਸੀ ਇਹ ਕਹਦੇ ਸੀ ਨਹੀਂ ਹੋਣ ਦੇਣ ਹੁਣ ਸ਼ਰੀਕਤ ਆ ਉਹਦੇ ਨਾਲ ਖੜਦਾ ਤਾਂ ਹੈ ਜੀ ਖਾਲਸਾ ਦਾ ਕੋਈ ਸ਼ਰੀਕਤ ਨਹੀਂ ਕਿਸੇ ਗੁਰੂ ਦਾ ਕੋਈ ਸ਼ਰੀਕਤ ਨਹੀਂ ਕਿਸੇ ਭਗਤ ਦਾ ਕੋਈ ਸ਼ਰੀਕਤ ਨਹੀਂ ਸ੍ਰੀ ਗੁਰੂ ਪਰਮੇਸ਼ਰ ਦਾ ਹੈ ਇੱਕ ਪਾਸੇ ਪਰਮੇਸ਼ਰ ਹੈ ਉਹ ਕਹਿੰਦਾ ਮੈਂ ਸੱਚ ਪੈਦਾ ਕਰਨਾ ਇੱਕ ਪਾਸੇ ਕੂੜ ਹੈ ਪਖੰਡਵਾਦ ਹੈ ਉਹ ਕਹਿੰਦਾ ਮੈਂ ਸੱਚ ਪੈਦਾ ਨਹੀਂ ਹੋਣਾ ਇਹ ਪ੍ਰਭੋਚ ਦਾ ਨਾਟਕ ਹੈ ਪ੍ਰਭੋਚ ਦਾ ਨਾਟਕ ਹੀ ਹੈ ਬਾਬ ਉਹ ਹੈ ਉਹ ਕਦੋਂ ਬੈ ਖਤਮ ਹੋ ਜੂ ਮੇਰਾ ਪਰਿਵਾਰ ਖਤਮ ਹੋ ਜੂ ਔਗੜ ਦੀ ਫੌਜ ਹੈ ਮੇਰਾ ਸਾਰੇ ਖਤਮ ਹੋ ਜਾਣਗੇ ਸਾਰੇ ਮਾਰੇ ਜਾਣਗੇ ਕਿਸੇ ਹੱਦੇ ਚ ਮੈਨੂੰ ਜਗ੍ਹਾ ਦੀ ਮਿਲਣੀ ਥੋੜ ਗੋੜ ਤਾਂ ਕੰਨ ਹੈ ਫੇਰ ਔਗੜ ਕੰਗ ਹੋ ਜਾਣਗੇ ਉਗਣਾਂ ਦਾ ਜੋਰ ਹੋ ਗਿਆ ਗੁਰਦਵਾਰ ਤੇ ਥੋੜੇ ਰਹਿ ਗਏ ਉਗਣ ਫਿਰ ਉੱਤੇ ਆ ਗਏ ਆ ਗਏ ਉੱਤੇ ਰਾਜ ਕਰੇਗਾ ਖਾਲਸਾ ਦੇ ਨਾਲ ਸਾਰੇ ਉਗਣ ਉੱਤੇ ਆ ਗਏ ਉਗਣਾਰੇ ਸਾਰੇ ਜਾਵੜੇ ਉਗਣਾਰੇ ਸਾਰੇ ਸਿੱਖ ਬਣ ਗਏ ਜਿਹੜੇ ਗੁਰੂ ਘਰ ਨੇੜੇ ਨਹੀਂ ਲੱਗੜ ਦਿੱਤੇ ਨੇੜੇ ਨਹੀਂ ਲੱਗੇ ਨਾ ਉਦੋਂ ਰਣਜੀਤ ਸਿੰਘ ਦੇ ਜ਼ਮਾਨੇ ਸਾਰੇ ਸਿੱਖ ਬਣ ਗਏ ਦਰਵਾਜ਼ਾ ਜੋ ਖੋਲਤਾ ਲੋਪੀਆ ਵਾਸਤੇ ਜਿਹੜਾ ਪਹਿਲਾਂ ਸੀ ਨਾ ਮੋਟਰ ਲੱਗਿਆ ਲੋਬੀ ਦਾ ਵਸਾ ਨਹੀ ਜਾਏ ਉਹ ਮੋਟਰ ਹਟਾਤਾ ਸਮਝਿਆ ਨਹੀਂ ਉਹ ਲਖਦਾ ਵੀ ਜਿਹੜਾ ਵੱਡਾ ਲੋਬੀ ਉਹ ਵੀ ਆਈਪੀ ਹੈ ਉਹ ਲਿਖਤਾ ਉਹ ਜਿਹੜੇ ਦੂਏ ਸੀ ਉਹ ਗੁੱਠੇ ਲੱਗੇ ਥੋੜੇ ਜਿਹੇ ਰਹਿ ਗਏ ਉਹ ਕਹਿੰਦੇ ਤਨਖਾਹ ਨਹੀਂ ਲੈਣੀ ਰਜਿਸਟਰ ਚ ਨੋਬਰੀ ਲਖੋੜ ਲੋਕਰੀ ਉਹ ਨਹੀਂ ਕਰਦੀ ਕੰਮ ਵੀ ਪੰਧਤਾ ਕਰਨਾ ਕਰਨਾ ਵੀ ਫਰੀ ਹੈ ਗੁਰੂ ਗੁਰੂ ਤਾਂ ਲੈਣ ਜਿਹੜਾ ਸਾਡੇ ਹੱਥ ਲਾ ਗਿਆ ਦੁਸ਼ਮਣ ਦਾ ਲੋਕੇ ਰੋਟੇ ਰੋੜੇ ਉਹ ਅਸੀਂ ਦੇਣਾ ਨਹੀਂ ਕਿਸੇ ਨੂੰ ਰਜਿਸਟਰ ਨੂੰ ਵੀ ਦੇਣਾ ਅਸੀਂ ਉਹ ਰਾਜਾ ਨਹੀਂ ਬੰਦੇ ਹਜ਼ਾਰ ਫੌਜਾਂ ਨਾਲ ਉਹ ਤਾਂ ਦੇਵਰੀ ਸੀ ਦਾਇਰੂ ਕੋ ਪੁੱਛਦਾ ਸੀ ਬਾਕੀ ਸਰਦਾਰ ਉਹ ਦਰਹਾ ਜਾਵੋ ਕਰੋੜਾਂ ਪੈਦੇ ਸੀ ਜੇ ਕੋ ਹੱਥਾਂ ਨੂੰ ਸਰਕਾਰ ਦੇ ਖਜ਼ਾਨੇ ਖਾਂਸਾ ਦੇ ਸੀ ਕਰਾਉਦਾ ਉਹਦੇ ਨਾਲੇ ਗੁਜ਼ਾਰਾ ਆਪਣੋ ਚੱਲਦਾ ਸੀ ਇਹਨਾਂ ਨੂੰ ਉਹਨਾਂ ਦਾ ਕਾਨੂੰਨ ਬੰਦਿਆ ਨਹੀਂ ਆਪਣਾ ਛੱਡਿਆ ਜੀ ਉਹ ਫੌਜ ਮਨਮੁੱਖਾਂ ਦੀ ਅਟ ਸੀ ਗੁਰਮੁਖੀ ਦੀ ਫੌਜ ਅਟ ਸੀ ਜਿੱਤੇ ਵਾਰ ਜੇ ਜਾਂਦਾ ਸੀ ਉਹਦਾ ਦੇਈ ਸਰ ਹੁੰਦਾ ਸੀ ਉੱਥੇ ਫਿਰ ਇਹਨੂੰ ਹੁੰਦਾ ਸੀ ਬਿਨਾਂ ਤਨਖਾਹ ਇਹ ਗੁਰੂ ਦੇ ਨਾਲ ਲੜਨ ਵਾਲੇ ਸੀ ਉਹ ਪੈਸੇ ਦੇ ਕੱਟ ਲੜਨ ਵਾਲੇ ਸੀ ਤਨਖਾਹਦਾਰ ਸੀ ਉਹ ਜਿਹੜੇ ਘਰ ਦੇ ਕੰਮ ਕਰਦੇ ਦੇ ਉਹ ਤਨਖਾਹਦਾਰ ਕਹਿੰਦੇ ਦੇ ਇਹ ਤਾਂ ਕਰਦੇ ਸੀਗੇ ਉਹ ਤਨਖਾਹਦਾਰ ਸੀ نوکر روزાળ دے والے فصل تے فری جڑ پر جو گھر دا انسان دا نا تے فصل نو پہچان ہوندی اے وی مالک اے کیا او گھیڑا مالک ای گڑے آویں اودی نگاہ ای پہچاندی اے فصل پشو وی نگاہ پہچاندا کتا وی نگاہ پہچاندا نوکر ہووے تھوڑا کتے نو لئی پھرے چاہے پر مالک مالک ہوندا اے نوکر نوکر ہوندا اے نوکر دا کتے دا ਇਹ ਗਲਾ ਹੋਵੇ ਬਲਕਿ ਦੱਸਦਾ ਹੁੰਦਾ ਤੂੰ ਪੂਰਾ ਹੀ ਦੱਸ ਬਲਕਿ ਥੋੜੀ ਕਰ ਲਓ ਕੁੱਤ ਕਰ ਦੇਸੀ ਉਹ ਨਾ ਪੂਰਾ ਕਰਕੇ ਨਹੀਂ ਕੱਢਾ ਸੀ ਜਿਹੜਾ ਗਲਾ ਟੁੱਟਦਾ ਨਹੀਂ ਸੀ ਫਤਿਹ ਖਾਲੀਫਾ ਦਾ ਸਾਨੂੰ ਭੇਜਿਆ ਟੁੱਟ ਗਿਆ ਨਾ ਗਲਾ ਅੜਕ ਜੜਿਆ ਹੋਇਆ ਕਹਿੰਦੇ ਜੀ ਹੁਣ ਬੈਨਾ ਅਰਦਾਸ ਕਰਾਂਤੀ ਫਿਰ ਕਹਿੰਦਾ ਰਹਿਣ ਦੋ ਕਹਿੰਦਾ ਅਸੀਂ ਅਰਦਾਸ ਕਰਕੇ ਰਹਿਣ ਦੋ ਵੇਈ ਬਤਾ ਕਾੜੇ ਅੜਕੀ ਹੁੰਦਾ ਇਤ ਰਿਆਉਗ ਨੂੰ ਘਰ ਸਿਰੂ ਇਹ ਪਰਮੇਸ਼ਰ ਚਾਹੁੰਦਾ ਹੈ ਜਾਣ ਕੇ ਉਹਨੇ ਦਰਿਆ ਚੜਾਇਆ ਪਾਣੀ ਪਾਇਆ ਇਹੀ ਚਾਹੁੰਦਾ ਹੁਣ ਚੱਲੂਗਾ ਭਾਰਵੀ ਕਰਕੇ ਕਲਾਵੀ ਤੋੜ ਲਿਆ ਜਦ ਸਵਾਸੀ ਸੀਧੀ ਤਾਂ ਉਹਦੇ ਹੱਥ 'ਚ ਐ ਜਮਨਾ ਬੰਦ ਉਹਦਾ ਤਾਂ ਕੋਈ ਰੌਣਾ ਨਹੀਂ ਏਕੀ ਕੱਸੀ ਸਰਦਾਰੀਆਂ ਕਿਨੇ ਲਈਆਂ ਘਰ ਦਾ ਜੜੀ ਲਈਆਂ ਨੌਕਰਾਂ ਦੇ ਲਈਆਂ ਘਰ ਦਾ ਰੋਲੀਆਂ ਸਰਦਾਰੀਆਂ ਦਰਗਾਹ 'ਚ ਨੌਕਰਾਂ ਰੋਲੀਆਂ ਇੱਥੇ ਬਾਹਰ ਉਹਨਾਂ ਦੇ ਦਰਗਾਹ 'ਚ ਸਰਦਾਰੀਆਂ ਤੇ ਉਹਨਾਂ ਨੇ ਕਰ ਲਿਆ ਜੀ ਝੂਠੀਆਂ ਝੂਠੀਆਂ ਲਈਆਂ ਝੂਠਿਆਂ ਨਾ ਸੱਚੀਆਂ ਲਈਆਂ ਸੱਚਿਆਂ ਤੇ ਸੱਚੀਆਂ ਸਰਦਾਰੀਆਂ ਦਾ ਨੋ ਚੱਲਦਾ ਝੂਠੀਆਂ ਦਾ ਖਤਮ ਹੋ ਗਿਆ ਬੱਲੇ ਲੈ ਸੱਚ ਝੂਠ ਦੀ ਹੈ ਝੂਠ ਦੇ ਓਵਰ ਥੋੜੀ ਹੁੰਦੀ ਹੈ ਜੀਸ ਦੀ ਬੱਲੇ ਬੱਲੇ ਬੜੀ ਹੋਈ ਖਤਮ ਹੋ ਗਈ ਕਾਲੀ ਬੂਲਾ ਜਦੋਂ ਹੋਈ ਹੋਈ ਓਦੋਂ ਘਟਦੀ ਉਣ ਜਿਆਦਾ ਉਦੋਂ ਦੱਬੀ ਆਵਾਜ਼ ਦੇ ਵਿੱਚ ਵਿਰੋਧ ਵੀ ਸੀ ਨਾਲ ਅੜੀ ਜਿਹਾ ਉਹਦੀ ਬੱਲੇ ਬੱਲੇ ਜਿਆਦਾ ਸੀ ਨਾ ਦੱਬੀ ਹੋਈ ਸੀ ਆਵਾਜ਼ ਸੀ ਨਾ ਹੁਣ ਟੋਲ ਬੰਦ ਹੋ ਗਿਆ ਉਹਨੂੰ ਥੋੜੀ ਆਵਾਜ਼ ਵੀ ਬੜੀ ਲੱਗਦੀ ਹੈ ਟੋਲ ਟੈਕ ਗਿਆ ਨਾ ਉਹ ਜਿਹੜਾ ਟੋਲ ਵਜਦਾ ਸੀ ਨਾ ਉਹ ਟੈਕ ਗਿਆ ਫਿਰ ਦਰਜੀਸ ਤੇ ਜੋ ਵੀ ਕੁਝ ਲਖਾਇਆ ਸੀ ਜੋ ਵੀ ਕੁਝ ਕੀਤਾ ਸੀ ਸਭ ਲੰਗਾ ਸੱਚ ਪ੍ਰਗਟ ਹੋ ਗਿਆ ਮੂਰਤੀਆਂ ਗੁਰਦੁਆਰੇ ਤੇ ਰਖਈਓ ਕੀ ਇਹਿਸ ਵਾਰ ਕੀ ਹੈ ਕਦੋਂ ਇਹ ਸਾਬਤ ਹੋ ਗਿਆ ਵੀ ਉਹਦੇ ਰਾਜਾ ਇਹ ਮੂਰਤੀ ਪ੍ਰਕਰਮਾ ਜ ਮੂਰਤੀਆਂ ਕਾਯ ਚਕਾਈਆਂ ਤਾਂ ਅਸੀਂ ਹੁਣ ਕਹਿੰਦੇ ਵੀ ਚੱਕੜੀਆਂ ਚਾਹੀਦੀਆਂ ਸੀ ਥੋੜਾ ਜਿਹੀ कहने ਵੀ ਇਤਿਹਾਸ ਵਿੱਚ ਵੀ ਜਿਹੜਾ पत्थर पूजा ਦਾ संकल्प ਵਿੱਚ ਹੈ ਗੁਰਦਾਰ ਦੇ ਰੋਡੇ 12 ਦੇ ਵਿੱਚ ਹੈ ਇਹ ਕੱਢਣਾ ਚਾਹੀਦਾ ਟੀਕਿਆਂ ਵਿੱਚ ਜੋ ਕੁਝ ਹੈ ਉਹ ਵੀ ਸੁਧਾਰ ਹੋਣਾ ਚਾਹੀਦਾ ਹੁਣੇ ਰੌਲਾ ਇਸੇ ਗੱਲ ਦਾ ਨਾ ਇਹ ਕਦੋਂ ਤੋਂ ਪਿਆ ਸਵਾਲੇ ਕਿਉਂ ਪਿਆ ਸਾਡਾ 150 ਸਾਲ ਦਾ ਹੀ ਰਾਜ ਗਿਆ 200 ਬੰਲੇ ਤੇ ਹੁਣ 47 ਚ 100 ਸਾਲ ਹੋ ਗਿਆ ਸੀ ਹਾਂ 150 ਸਾਲ ਹੋ ਗਿਆ 150 ਤੋਂ ਕੋਈ ਜ਼ਿਆਦਾ ਹੋ ਗਿਆ 1847 ਚ ਗਿਆ ਹੈ 1947 ਚ 100 ਸਾਲ ਹੋ ਗਿਆ 60 ਸਾਲ ਆ ਸਾਢੇ ਸਾਰੇ ਇਹ ਹੋ ਗਏ ਤੇ ਇੰਨਾ ਜਿਹਦੇ ਵਿੱਚ ਹੀ ਇਹ ਤਾਂ ਦੋ ਪੁਸਤਾਂ ਦੀ ਉਹ ਗੱਲ ਹੈ ਸੌ ਸੌ ਸਾਲ ਦੇ ਤਾਂ ਬੰਦੇ ਬੈਠੇ ਹੋਣੇ ਨੇ 90 ਰੁਪਏ ਸਾਲ ਦੇ ਇੱਕ ਕਦੋਂ ਦੋ ਹੋਇਆ ਹੈ ਗੜਬੜ ਇਹ ਪ੍ਰਚਾਰ ਕਦੋਂ ਤੋਂ ਹੋਇਆ ਹੈ ਕਿਉਂ ਹੋਇਆ ਜਿਹੜਾ ਅੱਜ ਸਾਨੂੰ ਗਲਤ ਲੱਗਦਾ ਉਹਨਾਂ ਨੂੰ ਗਲਤ ਕਿਉਂ ਨਾ ਲੱਗਿਆ ਇਹ ਗ੍ਰੰਥ ਕਮੇ ਲਿਖਿਆ ਗਿਆ ਉਹਨਾਂ ਦੇ ਰਾਜ ਵਿੱਚ ਉਹਨਾਂ ਨੇ ਖਰਚਾ ਦਿੱਤਾ ਸਤੌ 80 ਕਿਨੇ ਖਰਚਾ ਦਿੱਤਾ ਬਿਸਲਾਣੇ ਨੇ ਦਿੱਤਾ ਰੂੜੀਏ ਬੈਠਾ ਲਿਖਦਾ ਰਿਹਾ ਜੀਵ ਲਿਖਦਾ ਰਿਹਾ ਉਰਣਨਦਨ ਕੀ ਲਖਾਇਆ ਉਹਨੇ ਜਿਹੜਾ 25 25 33 ਪਰਨੇ ਥੱਲੇ ਦੇ ਉਹ ਇਹ ਨਹੀਂ ਬੜਦੇ ਇਹ ਲਖਾਇਆ ਨਾ ਸੋਚ ਪ੍ਰਕਾਸ਼ ਵਾਲੇ ਕਿਉਂ ਲਖਾਇਆ ਖੋਟ ਖੋਟ ਰਲੀ ਸੀ ਵੱਡੇ ਘੱਲੂ ਨੂੰ ਜਿਹਨੂੰ ਕਹਦੇ ਹੋ ਉਹ ਵੀ ਕੀ ਹੈ ਉਹ ਜਿਸ ਕਹਿ ਰਿਹਾ ਉੱਠ ਕੇ ਜਿਹੜਾ ਜਸੂਆ ਕਹਿੰਦਾ ਖੋਟ-ਖੋਟ ਨਿਕਲੀ ਆ ਖਾਲਸੇ ਚੋ ਸ਼ੁੱਧ ਖਾਲਸਾ ਹੁਣ ਹੋਇਆ ਉਹ ਖੁਦ ਖੋਟ ਕਹਿ ਰਿਹਾ ਆਪਣੇ ਰੂਹ ਤੁਸੀਂ ਰੋਜ਼ ਕਮਿਸ਼ਨ ਤੁਹਾਨੂੰ ਸੁਣਾਉਂਦੇ ਨੇ ਉਹ ਬਟ ਕਰਦਾ ਸਾਡੇ ਚ ਖੋਟ ਹੈ ਤੁਸੀਂ ਉਹਨਾਂ ਨੂੰ ਸ਼ਹੀਦ ਕਹਿੰਦੇ ਉਹ ਕਹਿੰਦਾ ਖੋਟ ਨਿਕਲੀ ਆ ਖੋੜ ਵੀ ਕਹੀ ਜਾਂਦੇ ਹੋ ਸ਼ਹੀਦ ਵੀ ਕਹੀ ਜਾਂਦੇ ਹੋ ਖੋਟੇ ਦਾ ਸਿੱਟੀੇ ਬਾਰ-ਬਾਰ ਹੁੰਦਾ ਸ਼ਹੀਦ ਦਰਗਾਹ ਜਾਦਰ ਗੁਰਬਾਣੀ ਦੀ ਪਗਤੀ ਆਏ ਕਹਿੰਦੀ ਹੈ ਜੇ ਤਾਂ ਉਹ ਖੋਟ ਕਹਿੰਦਾ ਨਿਕੜਿਆ ਤਾਂ ਦੋ ਝੂਠ ਅਸੀਂ ਵੀ ਕਹੋ ਅਸੀਂ ਕਹੋ ਗਲਤ ਕਹਿੰਦਾ ਅਸੀਂ ਖੋੜ ਲਈ ਸੀ ਅਸੀਂ ਉਹ ਵੀ ਗੱਲ ਬੜੀ ਸ਼ਾਨ ਨਾਲ ਕਹਿੰਦੇ ਖੋੜ-ਖੋੜ ਨਿਕਲੀ ਆ ਉਹਦੀ ਗੱਲਾਂ ਨੂੰ ਫੁੱਲ ਤਾਂ ਚੜਦੇ ਨੇ। ਤੇ ਦੇ ਵਿੱਚ ਫੇਰ ਹੋ ਗਈ ਤਕੜੇ ਹੋ ਗਏ। ਰਾਜ ਖੋ ਲਿਆ। ਜਿਹੜਾ ਰਾਜ ਪ੍ਰਬੰਧ ਦਾ ਝਗੜਾ ਹੈ, ਬਾਇਆ ਦਾ ਝਗੜਾ ਹੈ। ਇਹ ਖੋਟ ਪਰਦਾ ਹੋ ਰਿਹਾ ਹੈ। ਇਹ ਖੋਟ ਪਰਦਾ ਦਾ ਝਗੜਾ ਗੁਰਮਤਿ ਨਾਲ ਕੋਈ ਸਮਝ ਬੋਲਣੀ। ਲੜਾਈਆਂ ਲੜੀਆਂ ਨੇ। ਕਿਵੇਂ ਬਾਸ਼ਾ ਦੇ ਵੀ ਲੜੀਆਂ ਨੇ ਤਸਬਾਸ਼ਾ ਦੇ ਵੀ ਲੜੀਆਂ ਨੇ ਪਰ ਉਹ ਲੜਾਈ ਜੋ ਧੀ ਲੜੀਓ ਜਿਹਦਾ ਵਾਸਤੇ ਉਹ ਲਿਖਦੇ ਨੇ ਤਨ ਔਰ ਭੂਵ ਪ੍ਰਾਤਨ ਬੈਰਾ ਤਦੁਕਰਤ ਬੋਲਦਾ ਹੁਣ ਬੇ ਇਹ ਤੁਸੀਂ ਕਹਿੰਦੇ ਹੋ ਯਾਕ੍ਰੀਤਾ ਹੈ ਵਿਦਵਾਨਾ ਤਨ ਔਰ ਭੂਵ ਪ੍ਰਾਤਨ ਬੈਰਾ ਤਾਂ ਕਾ ਜਗਤ ਕਰਕੇ ਰਾ ਸੰਸਾਰ ਦੀ ਲੜਾਈ ਹੈ ਜਗਤ ਧਾਨਾ ਔਰ ਭੂਪ ਦੇ ਘੇੜਾ ਕਰਦਾ ਕਰਦਾ ਸਾਰਾ ਮਰੀ ਜਾਂਦਾ ਹੈ ਉਹ ਵਰਜ ਹੁੰਦਾ ਹੈ ਜਿਹੜੇ ਅਮਰ ਨੇ ਉਹ ਧਾਨਾ ਔਰ ਭੂਪ ਦੀ ਲੜਾਈ ਉਹ ਨਹੀਂ ਹੁੰਦੀ ਉਹ ਜਿਹੜੀ ਧਾਨਾ ਔਰ ਭੂਪ ਦੀ ਲੜਾਈ ਹੈ ਇਹਨਾਂ ਗੁਰੂਆਂ ਦੀ ਰਹੀ ਹੈ ਨਾ ਖਾਲਸੇ ਦੀ ਰਹੀ ਹੈ ਨਾ ਕਹ ਨੂੰ ਰਹੂਗੀ ਜਿਹਦੀ ਇਹ ਲੜਾਈ ਹੈ ਧਾਨਾ ਔਰ ਭੂਪ ਦੀ ਉਹ ਤਾਂ ਮਨਮੁਖ ਹੈ ਜੇ ਆਪਣੇ ਆਪ ਨੂੰ ਉਹ ਸਿੱਖ ਸਮਝਦਾ ਤਾਂ ਸਿੱਖੀ ਦਾ ਕਲੰਕ ਕਾਹੋ ਸਿੱਖੀ ਨੂੰ ਕਲੰਕਿਤ ਕਰ ਰਿਹਾ ਹੈ ਕਰ ਰਹੇ ਨੇ ਉਹ ਲੋਕ ਜਿਉ ਸਮਝਦੇ ਨੇ ਸਾਡੇ ਕੋਲ ਪੰਕਤੀਓ ਵਜੂਦ ਪਈਓ ਨੇ ਅਸੀਂ ਇਤਿਹਾਸ ਨੂੰ ਇੱਕ ਪਾਸੇ ਛੱਡ ਦਿੱਤਾ ਕਿਤਾਬ ਮਨੁੱਖਾ ਲਿਖਿਆ ਹੁੰਦਾ ਜੋ ਸਾਡੇ ਜਿਹਨਾਂ ਨੂੰ ਅਸੀਂ ਗੁਰੂ ਮੰਨਦੇ ਹਾਂ ਦਰਨタルੂ ਜਿਹੜਾ ਉਹਨਾਂ ਦੀਆਂ ਲਿਖਤਾਂ ਦੇ ਵਿੱਚ ਦੇਖੋ ਕੀ ਹੈ ਗੁਰਬਾਣੀ ਦੇ ਵਿੱਚ ਦੇਖੋ ਕੀ ਹੈ 10 ਉਕਰ ਦੇਖੋ ਕੀ ਹੈ ਉੱਥੋਂ ਸੇਧ ਲੋ ਜਿਹੜਾ ਉਹਨਾਂ ਦਾ ਆਪਣਾ ਸਾਨੂੰ ਸੇਧ ਦਿੱਤੀ ਹੋਈ ਹੈ ਤਾਨਾਰ ਭੂਪ ਦੀ ਲੜਾਈ ਦਈ ਹੈ ਇਹ ਸੰਸਾਰ ਦੀ ਲੜਾਈ ਹੈ ਤਾਨਾਰ ਭੂਪ ਤਾਂ ਇਥੇ ਰਣ ਤੰਦਾਰਾ ਸਤਪਤੀ ਆਦ ਲੈ ਲੋ ਨਾ ਇਹਨੂੰ ਬੁਲਾ ਦਨੇ ਆਦ ਆਲੀ ਪੰਕਤੀ ਇਹ ਤਾਂ ਦਸਬਦੀ ਆ ਤੁਸੀਂ ਮੰਨਦੇ ਨਹੀਂ ਆਦ ਆਲੀ ਬੁਲਾ ਦਨੇ ਹੁਣ ਇਹਨੂੰ ਬੁਲਾ ਕੇ ਦੇਖ ਲੈਣੇ ਹਾਂ ਵੀ ਇਹ ਨੂੰ ਸਰਟੀਫਾਈ ਕਰਦੀ ਐ ਜੀ ਇਹਦੇ ਖਿਲਾਫ ਖੜਿਆ ਆਦ ਗੁਰੂ ਗ੍ਰੰਥ ਜਿੰਨ ਆਪਣੀ ਕਰਮਾਨ. ਉਹ ਤਾਂ ਕਹਿ ਵੀ ਤੂੰ ਆਪਣੀ ਬੰਦ ਰਹਿ ਨੂੰ ਇਹ ਜਹਤ ਲੜਾਈ ਛੱਡ ਦੇ ਕਿ ਤੇਰੀ ਹੋਈ ਨਹੀਂ ਅਸੀਂ ਕਿਵੇਂ ਬੰਦ ਲਈ ਅਸੀਂ ਕਿਹੜੀ ਹੋਪਲੈਂਡ ਦੀ ਲੜਾਈ ਕਰ ਲੜ ਰਹਿ ਜਾ ਹਾਲੇ ਵੀ ਹੋਪਲੈਂਡ ਖਾਲਸੇ ਦਾ ਹਿੱਦੜਾ ਜਿੱਥੇ ਜਾ ਨੂੰ ਬਾਜ਼ਾਰਸ ਲੈ ਇਹ ਸਭ ਸੰਸਾਰੀ ਆਦਮੀ ਦੇ ਇਸ ਸੰਸਾਰ ਦੀ ਤਰਬ ਨਹੀਂ ਹੈ ਡਰਾਹਾਰੀ ਤਰਬ ਹੈ ਕਿ ਅਸਬਗਾੜ ਇਹਦੇ ਅਰਥ ਵਿਗੜ ਨਹੀਂ ਦੇਣੇ ਜਿਹੜੇ ਬਗਾੜੇ ਹਨ ਠੀਕ ਕਰ ਲੈਣੇ ਨੇ ਅਸੀਂ ਸਰੀਰਕ ਜਨਮ ਨੂੰ ਗੁਰਬਾਣੀ ਜਨਮਦਿਓ ਨਹੀਂ ਖਾਲਸਾ ਜੋਗਲੇਟ ਕਿਹੋ ਹੈ ਕਬੀਰ ਕਿੱਥੇ ਪੈਦਾ ਹੋਇਆ ਕਬੀਰ ਖਾਲਸਾ ਬਲਕਿ ਕਹਤਾ ਸੀ ਨਾ ਮੂਰਖ ਸੀ ਉਹ ਈਸੀ ਕਬੂਰਸ ਨੂੰ ਮੈਂ ਦੱਸਣਾ ਕਿ ਉਹ ਕਿਉਂ ਮੂਰਖ ਸੀ ਖਰ ਦਾ ਪਹਿਲਾ ਲਫਜ਼ ਕਬੀਰ ਨੇ ਵਰਤੇ ਬਾਣੀ ਚਪੜੀ ਕਬੀਰ ਇੱਥੇ ਜੰਮਿਆ ਨਹੀਂ ਪੰਜਾਬ ਚ ਉੱਥੋਂ ਸ਼ੁਰੂ ਹੋਇਆ ਖਾਲਸਾ ਉਹ ਖਾਲਸਾ ਸੀ ਕਬੀਰ ਸਾਰੇ ਵਕਤ ਖਾਲਸੇ ਦੇ ਖਾਲਸਾ ਜਿਹੜਾ ਹੈਗਾ ਕਾਲ ਇਹ ਠੀਕ ਹੈ ਜੜ ਜੜਾ ਇੱਥੇ ਫੜੀਏ ਪੰਜਾਬ ਇਹਦੇ ਵਿੱਚ ਕੋਈ ਸ਼ੱਕ ਨਹੀਂ ਲੜਾਈ ਇੱਥੇ ਲੜੀ ਗਈ ਹੈ ਧਰਮ ਦੀ ਜੜ ਤਰੁਦਾ ਜਿਹੜਾ ਬਿਰਸ਼ਾ ਹੈ ਉਹਦੀ ਜੜ੍ਹੇ ਪੰਜਾਬ ਚ ਹੈ ਪਹਿਲਾਂ ਦੀ ਇਲਾਕੇ ਪੰਜਾਬ ਚ ਜੜ੍ਹ ਰਿਵੈਂਡ ਜੋ ਬਪਰੀ ਹੈ ਸਭ ਤੋਂ ਪਹਿਲੀ ਉਹ ਬਰਸਾ ਲਿਖੀ ਗਈ ਹੈ ਗੀਤਾਂ ਲਿਖੀ ਗਈ ਹੈ ਉਹ ਆਪ ਹੋਏ ਲਿਖੀ ਗਈ ਹੈ ਕੁਲਛਤ ਲਿਖੀ ਗਈ ਵੀ ਪੰਜਾਬ ਅਸੀਂ ਪ੍ਰਣ ਪਾਵੇ ਗੁਰਬਾਣੀ ਲਿਖੀ ਗਈ ਹੈ ਵੀ ਲਿਖੀ ਗਈ ਹੈ ਪਰ ਗੁਰਬਾਣੀ ਇਹ ਤੋਂ ਬਾਹਰ ਵੀ ਲਿਖੀ ਗਈ ਹੈ ਗੁਰਬਾਣੀ ਦਾ ਪਹਿਲਾ ਸੈਂਟਰ ਮੰਗਰ ਹੈ ਇੱਥੇ ਹੈ ਨਹੀਂ ਪੰਜਾਬ ਚ ਜਿੱਦੋਂ ਕਬੀਰ ਨੂੰ ਯਾਰ ਹੋਵੇ ਤੁਸੀਂ ਮੰਨ ਸਕਦੇ ਹੈਗਾ ਸੈਕਟਰ ਉੱਥੇ ਪਰ ਬੇਦ ਪੰਜਾਬ ਚ ਲਿਖਿਆ ਗਿਆ ਜੀ ਬੇਦ ਨਾ ਜਾਇਆ ਐਸਾ ਹਿਮਾਚਲ ਨੂੰ ਦੇਪੂ ਵੀ ਕਹਿੰਦੇ ਕੁੱਲ ਬਲਾ ਕੇ ਜਾੜੇ ਤੇ ਪੰਜਾਬ ਚ ਸਾਰੇ ਬੰਦੇ ਨੇ ਇਸ ਗੱਲ ਪਰ ਬਿਰਸ਼ਤਾ ਦੂਰ ਤੱਕ ਪਹੁੰਚਿਆ ਹੈ 14 ਦੂਰ ਤੱਕ ਹੈ ਫੇਰੇ ਤਾਂ ਸਾਰੇ ਸ਼ੌਂਦੇ ਰੇ ਬਿਰਸ਼ ਤਰਬਰ ਤੇ ਇੱਕੋ ਹੀ ਹੈ ਅਨੰਤ ਦਾਰਸ਼ਕ ਜਿੱਥੇ ਤੱਕ ਜੇ ਘਰਸ਼ਾ ਕਾਲਪੁਰਖੀ ਫੌਜ ਹੈ ਜਿੱਥੇ ਤੱਕ ਅਕਾਲਪੁਰਖ ਦਾ ਰਾਜ ਹੈ ਜਿੱਥੇ ਤੱਕ ਅਕਾਲਪੁਰਖ ਦਾ ਹੁਕਮ ਚੱਲਦਾ ਹੈ ਉਥੇ ਤੱਕ ਖਾਲਸਾ ਦੀ ਹੋਂਦ ਹੈ ਉੱਤੇ ਤੱਕ ਸਰ ਕੋਈ ਨਹੀਂ ਰੋਕ ਸਕਦਾ ਐਂਟਰੀ ਤੋਂ ਜਿੱਤੇ ਤੱਕ ਹਿੰਦੁਸਤਾਨ ਦਾ ਰਾਜ ਹੈ ਉੱਤੇ ਤੱਕ ਹਿੰਦੁਸਤਾਨ ਦੀ ਫੌਜ ਨੂੰ ਕੋਈ ਰੋਕ ਸਕਦਾ ਲੋਕਾਂ ਕੋਈ ਕਿਹੜੇ ਘਰੋਂ ਦਾ ਕੈਦ ਰਿਹਾ ਉਹ ਬੰਦਾ ਸਿੱਖ ਇਹ ਆਪਣੇ ਰਾਜ ਦੀ ਗੱਲ ਕਰਦੇ ਨੇ ਇਹਨਾਂ ਦੀ ਬੁੱਧੀ ਹੈ ਸੀਮਤ ਇਹ ਆਪਣੇ ਨਾਲ ਗੁਰਬਾਣੀ ਨੂੰ ਆਪਣੇ ਕੁਝੇ ਵਿੱਚ ਬੰਦ ਕਰਦੇ ਨੇ ਖਾਲਸਤਾਨ ਜਗਤ ਫੈਲੂ ਤਾਂ ਥੋੜਾ ਪਿਓ ਇਹ ਉਹਦੇ ਨੂੰ ਬੰਦ ਕਰ ਦਿਓ ਫੇਰ। ਹੈਲੋ ਕਬੇ। ਉਹ ਵੈਨੋ ਸਾਰੇ ਸੰਸਾਰ ਚ ਰਹਿ ਜਾਵੇ। ਸੀਮਾ ਤੁਸੀਂ ਡੇੜੇ ਬਲੋ ਰਹੀ ਹੋ ਇਹਦੀ। ਗੱਲਾਂ ਖਾਲਸਾਣ ਦੀਆਂ। ਗੱਲਾਂ ਖਾਲਸਾਣ ਦੀ ਕਰਦੇ ਹਾਂ। ਆਖਰ ਕਰ ਦੇਗੀ। ਬਲੈਕਮੇਲ ਕਰਕੇ ਆ ਬੁੱਧੀ ਹੀਰੋ। ਬੁੱਧੀ ਦਾ ਧਰਮ ਨਹੀਂ ਹੈ ਤੇ ਬੁੱਧੀ ਦਾ ਧਰਮ। ਬੁੱਧੀ ਵਾਨੇ ਦਾ ਪ੍ਰਚਾਰ ਕਰਨਗੇ। ਬੁੱਧੀ ਵਾਨੇ ਨੂੰ ਸਕਦੇ ਨੇ। ਜਿਹਨੂੰ ਮਾਇਆ ਦੀ ਭੁੱਖ ਹੈ ਜਿਹਨੂੰ ਰਾਜ ਦੀ ਭੁੱਖ ਹੈ ਜਿਹੜਾ ਸਿਆਸਤਦਾਨ ਹੈ ਪਹਿਲਾਂ ਤੋਂ ਬੇਈਮਾਨ ਹੁੰਦਾ ਦੂਜਾ ਉਹ ਤੇ ਸਵਾਰਥ ਹੁੰਦਾ ਜਿੱਥੇ ਰਾਜ ਹੁੰਦਾ ਪਹਿਲਾਂ ਸਵਾਰਥ ਹੈ ਪਰ ਇਹਦਾ ਪਰਮਾਰਥ ਹੈ ਤਰਮ है. ਹੈ ਸੰਸਾਰ ਸਵਾਰਥ ਹੈ ਰਾਜ ਦੀ ਭੁੱਖ ਮਾਇਆ ਦੀ ਭੁੱਖ ਸਵਾਰਥ ਹੈ ਸਵਾਰਥ ਪਰਮਾਰਥ ਇਕੱਠੇ ਰਹਦੇ स्वार्थ ਛੱਡ ਕੇ ਹੀ ਪਰਵਾਸ पला ਪੱਲਾ ਪੱਲਾ ਪਕੜਿਆ ਜਾ ਸਕਦਾ ਹੈ ਆਪਣੀ ਮਰਜ਼ੀ ਛੱਡਣਾ ਸੰਸਾਰ पला ਵਿੱਚ ਸਵਾਰਥ ਦਾ ਪੱਲਾ ਛੱਡਣਾ ਹੈ ਹੋਰ ਕੁਝ ਨਹੀਂ ਆਪਣੀ ਮਰਜ਼ੀ ਸਵਾਰਥ ਨਾਲ ਜੁੜੀ ਹੋਈ ਹੈ ਸਾਡੇ ਨਾਲ ਉਹ ਇੱਕ ਸਟੈਪ ਗੱਲ ਚੱਲਿਆ ਗਿਆ ਫਿਰ ਜਿੰਨਾ ਸਾਡਾ ਸਵਾਰਥ ਹੈ ਉਹ ਚੋਂ ਮਰਜ਼ੀ ਪੈਦਾ ਇਸ ਹਰਕੇ ਪਰਮਾਰਥ ਉਤੇ ਹੋਈ ਨਹੀਂ ਸਕਦਾ ਜਿੱਥੇ ਸਵਾਰਥ ਹੈ ਕਿਤੇ ਮਰਜੀ ਹੈ ਉਥੇ ਹੋਈ ਨਹੀਂ ਸਕਦਾ タルਮ ਉਥੇ ਗਾਇਬ ਹੋ タル ਜਿੱਥੇ ਤੱਕ ਸਵਾਰਥ ਹੈ ਉਥੇ ਤੱਕ タルਮ ਗਾਇਬ ਹੈ ਇਹ ਸਾਡੇ ਵਾਲਾ タルਮ ਗਾਇਬ ਹੈ ਜਿਹੜਾ ਦੋ タルਮ ਹੈ ਉਹ ਦੂਆ タルਮ ਉਹ ਮੁਸਲਮਾਨ ਵਾਲਾ ਹੋ ਸਕਦਾ ਹੈ ਵਾਲਾ ਹੋ ਸਕਦਾ ਹੈ ਵਾਲਾ ਹੋ ਸਕਦਾ ਔਰ ਡੁਪਲੀਕੇਟ ਧਰਮ ਹੋ ਸਕਦਾ ਸੱਚਾ ਧਰਮ ਨਹੀਂ ਹੋ ਸਕਦਾ ਝੂਠਾ ਧਰਮ ਹੋ ਸਕਦਾ ਤੇਰੀ ਉਦ ਇਹਦੇ ਵਿੱਚ ਸਵਾਰਥ ਵਾਸਤੇ ਸਵਾਰਥੀ ਵਾਸਤੇ ਕੋਈ ਜਗ੍ਹਾ ਨਹੀਂ ਸਵਾਰਥੀ ਦੀ ਦੰਦਿਆ ਕੀਤੀ ਹੋਈ ਹੈ ਇਹਦੇ ਵਿੱਚ ਤਪਾ ਨਹੀਂ ਲੋਭੀ ਹੈ ਜੇ ਲੋਭੀ ਆ ਤਾਂ ਤਪਾ ਨਹੀਂ ਇਹ ਤਪਾ ਤੁਸੀਂ ਕਿਸੇ ਗੱਲੋਂ ਦੱਸੋ ਵੀ ਇਹ ਕਿਸ ਗੱਲੋਂ ਅਸੀਂ ਠੀਕ ਆ ਸਿੱਖ ਕਿਸ ਐਂਗਲ ਤੋਂ ਅਸੀਂ ਸਿੱਖੀ ਤੇ ਖੜੇ ਹਾਂ ਕਿਸ ਪੱਖ ਤੋਂ ਅਸੀਂ ਸਿੱਖ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਗੱਲੀ ਵਾਤੀ ਚੰਗੀਆਂ ਆਚਾਰੀ ਬੁਰੀਆਂ ਅਚਾਨਤ ਸਿੱਖੀ ਤੋਂ ਖਿਲਾਫ ਹੈ ਗੱਲਾਂ ਬਾਤਾਂ ਸਾਰੀਆਂ ਸਿੱਖੀ ਵਾਲੀਆਂ ਨੇ ਜੋ ਕੁਝ ਕਿਹਾ ਹੋਇਆ ਅਸੀਂ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਉਹ ਅਸੀਂ ਬੜੇ ਹੋਏ ਹਾਂ ਉਹ ਸਾਡੇ ਤੇ ਲਾਗੂ ਨਹੀਂ ਸੀ ਉਹ ਲੋਕਾਂ ਨੂੰ ਨਹੀਂ ਕਹਿਣੀਆਂ ਇਹ ਗੱਲਾਂ ਉਦੋਂ ਉਹਨਾਂ ਧਰਮ ਵਾਲਿਆਂ ਨੂੰ ਗੱਲਾਂ ਕਹਿੰਦੇ ਸੀ ਅੱਜ ਉਹ ਸਾਰਾ ਗੰਦ ਕਿਉਂਕਿ ਸਾਡਾ ਅੱਜ ਧਰਮ ਇੱਕ ਕੰਪਲੀਟ ਧਰਮ ਹੋ ਗਿਆ ਨਾ ਇੱਕ ਪੰਥ ਹੋ ਗਿਆ ਨਾ ਪੂਰਾ ਚਲਾਇਆ ਹੋਇਆ ਅੱਜ ਅਸੀਂ ਆਪਣਾ ਬਿਹੜਾ ਸਾਫ਼ ਕਰਨਾ ਆਪਣਾ ਬੰਦ ਸਾਫ਼ ਕਰਨਾ ਆਪਣਾ ਅੰਦਰ ਸਾਫ਼ ਕਰਨਾ ਲੋਕਾਂ ਨੂੰ ਨਹੀਂ ਕਹਿਣਾ ਕਿਉਂਕਿ ਜੇ ਸਾਫ਼ ਕਰ ਲਾਂਗੇ ਤਾਂ ਅਸੀਂ ਲੋਕਾਂ ਨੂੰ ਲੀਡ ਕਰ ਸਕਦੇ ਹਾਂ ਤਾਂ ਇਹ ਲੀਡਰ ਬਦਲ ਲੀਡ ਲੀਡ ਅਸੇ ਕਰਨਾ ਲੀਡ ਕੁਝ ਨਹੀਂ ਕਰਨਾ ਸੀ ਦੱਸਣ ਹੀ ਹੈ ਰੱਦ ਖਾ ਸਕਦੇ ਉਹਨੇ ਕਹਿ ਲੋ 10000 ਰੁਪਏ ਬਖਾ ਸਕਦੇ ਚੱਲਣਾ ਨਾ ਚੱਲਣਾ ਚੱਲਣ ਵਾਲੇ ਦੀ ਮਰਜ਼ੀ ਹੁੰਦੀ ਗੁਰੂਆਂ ਨੇ ਰੱਤਾ ਸਿਆ ਪਤਾਰੇ ਨੇ ਰੱਤਾ ਸਿਆ ਦਿਖਾਇਆ ਚੱਲਣਾ ਨਾ ਚੱਲਣਾ ਉਹਦੀ ਮਰਜ਼ੀ ਚੱਲਣ ਵਾਲੇ ਦੀ ਹੁਣ ਅੱਜ ਕਹਿ ਰਹੇ ਨੇ ਵੀ ਸਾਨੂੰ ਪਤਾ ਨਹੀਂ ਰਾ ਦੱਸੋ ਕੀ ਦਿਖਾਓ ਕੀ ਜੇ ਜੀ ਨਹੀਂ ਦਿਖਾਉਂਦੇ ਨਹੀਂ ਦੱਸਦੇ ਤਾਂ ਕਸੂਰ ਸਾਡਾ ਹੈ ਜਿਹੜੇ ਸਾਰੇ ਵਿਸ਼ਵ ਸੰਬੇਲਨ ਹੁੰਦੇ ਧਰਮ ਦੇ ਕਾਦੇ ਵਾਸਤੇ ਹੁੰਦੇ ਨੇ ਇਸੇ ਵਾਸਤੇ ਹੁੰਦੇ ਨੇ ਉਹ ਤੇ ਗੱਲਾਂ ਕਿਹੜੀਆਂ ਕਰਦੇ ਨੇ ਅਭਜੀਤ ਸਿੰਘ ਨੂੰ ਭੇਜ ਦਿੰਦੇ ਨੇ ਇਹਨੂੰ ਕੀ ਪਤਾ ਕੀ ਹੈ ਬਲ ਆ ਜੀ ਸਰਬੱਤ ਦਾ ਭਲਾ ਠੀਕ ਹੈ ਲਿਖਿਆ ਹੋਇਆ ਤੁਸੀਂ ਸਰਬੱਤ ਦਾ ਭਲਾ ਕਹਿੰਦੇ ਸੋਚਿਆ ਸਰਬੱਤ ਦਾ ਭਲਾ ਕਿਵੇਂ ਤੁਸੀਂ ਕਰਦੋਗੇ ਆਪਣਾ ਹੀ ਕਰ ਲੋ ਆਪਣਾ ਭਲਾ ਦੀ ਜਿਹੜਾ ਕਰ ਸਕਦਾ ਸੋਚ ਸਕਦਾ ਆਪਣੇ ਭਲੇ ਵਾਸਤੇ ਦੀ ਕੁਝ ਕਰ ਰਿਹਾ ਦੂਏ ਦਾ ਭਲਾ ਕਿੱਥੋਂ ਕਰ ਦੂ ਕੇ ਕੀ ਅਰਥ ਸਰਬੱਤ ਦਾ ਭਲੇ ਦੇ ਸਰਬੱਤੇ ਭਲੇ ਦੇ ਵੀ ਅਰਥ ਕੱਢ ਕੋਲ ਬੈਠੇ ਪੂਰੀ ਭਗਤੀ ਬੜੋ ਉਹਦੇ ਪਾਣੀ ਜੀਲੇ ਤੇ ਸਾਰਿਆਂ ਦਾ ਭਲਾ ਹੀ ਭਲਾ ਜਿਹੜਾ ਪੜ੍ਹੇ ਚੱਲੂ ਉਹਦਾ ਭਲਾ ਨਾਨਕ ਦਾ ਨਾਮ ਚੜ੍ਹਦੀ ਕਲਾ ਜਿਹੜਾ ਨਾਨਕ ਨੇ ਦੱਸਿਆ ਨਾਮ ਹੈ ਨਾ ਉਹਦੇ ਨਾਲ ਚੜ੍ਹਦੀ ਕਲਾ ਹੈ ਚੜ੍ਹਦੀ ਕਲਾ ਹੁੰਦੀ ਹੈ ਉਹਦੇ ਨਾਲ ਬੁੱਧੀ ਉੱਪਰ ਤੇ ਉੱਪਰ ਚਾਈ ਜਾਂਦੀ ਹੈ ਰੋਜ਼ ਬੁੱਧੀ ਦਾ ਵੱਲ ਵਧਦਾ ਰਹਿੰਦਾ ਚੜ੍ਹਦੀ ਕਲਾ ਦਾ ਮਤਲਬ ਹੈ ਬੁੱਧ ਬਲ ਸਟਰੋਂਗ ਹੁੰਦਾ ਰਹਦਾ ਰੋਜ਼ ਰਵੀ ਕਲਾ ਉਹਦੀ ਹੈ ਸ਼ਕਤੀ ਬੁੱਧ ਦਾ ਬਲ ਰੋਜ਼ ਵੱਧਦਾ ਉਹਦੇ ਨਾਲ ਲੰਬੀ ਨਦਰ ਦੂਰ ਤੱਕ ਹੁੰਦੀ ਜਾਂਦੀ ਸੋਚ ਹੁੰਦੀ ਜਾਂਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਤਾਂ ਹੋ ਸਕਦਾ ਹੈ ਤੇਰਾ ਬਾਣਾ ਸਰਬੱਤ ਦਾ ਭਲਾ ਹੀ ਹੈ ਕਰਦਾ ਤੇਰਾ ਤੇਰਾ ਹੁਕਮ ਹੈ ਸਾਰਿਆਂ ਦੇ ਭਲੇ ਵਾਸਤੇ ਉੱਤੇ ਹੋਏ ਨਹੀਂ ਕੁਛ ਹੋਰ ਇਹ ਕਹੋ ਕਿ ਕੁਛ ਕਰਾ ਅਰਥ ਤਾਂ ਆ ਬੜਦਾ ਇਹਦਾ ਖਬਰ ਹੈ ਤੁਸੀਂ ਕੀ ਅਰਥ ਬਣਾਈ ਬੈਠੇ ਤੁਸੀਂ ਭਲਾ ਕੇ ਮੈਂ ਕਰਦੇ ਕਿਵੇਂ ਸੋਚਦੇ ਹੋ ਇਹ ਸੱਚਖੰਡ ਦੀ ਗੱਲ ਹੈ ਤੁਸੀਂ ਸੋਚਦੇ ਹੋਏ ਤੁਸੀਂ ਖੜੇ ਹੋ ਤੇ ਖਿਲਾਫ ਪ੍ਰੈਕਟੀਕਲੀ ਤੁਸੀਂ ਤਾਂ ਖਿਲਾਫ ਖੜੇ ਹੋ ਕਿਹੜਾ ਸਰਬਾਦਾ ਭਲਾ ਕੀਤਾ ਤੁਸੀਂ ਗੁਰੂਏ ਦੱਸ ਜਿੱਦੋਂ ਜਰ ਭਾਣਾ ਮੰਨਣ ਦੀ ਗੱਲ ਖੁਦ ਭਾਣਾ ਨਹੀਂ ਮੰਨਦੇ ਜਿਹੜਾ अपना ਭਲਾ ਦੀ ਸੋਚਦਾ ਆਪਣਾ ਭਲਾ ਨਹੀਂ ਕਰ ਸਕਦਾ ਦੂਸਰੇ ਦਾ ਕਿ कर ਅਸੀਂ ਤੂੰ ਉਸੇ ਦਾ ਭਲਾ ਕਿਉਂ ਕਰਦਾ ਪਰਮੇਸ਼ਰ ਇਹ ਕਰ ਸਕਦਾ ਭਲਾ ਸਭ ਦਾ ਅਸੀਂ ਨਹੀਂ ਕਰ ਸਕਦੇ ਅਸੀਂ ਤਾਂ ਆਪਣਾ ਭਲਾ ਕਰ ਸਕਦੇ ਜੇ ਕਰਨਾ ਹੋਵੇ ਉਹ ਵੀ ਪਹਾੜੇ 'ਚ ਰਹਿ ਕੇ ਹੋਊਗਾ ਵੈਸੇ ਨਹੀਂ ਹੋਊਗਾ ਥੋਕ ਵਿੱਚ ਰਹਿ ਕੇ ਹੋਊਗਾ ਗੁਰਬਾਣੀ ਜੇ ਅਸੀਂ ਸੋਚੀਏ ਜਦੋਂ ਅਮੀਰ ਹੋ ਕੇ ਪੰਜਾਬ ਨੂੰ ਸੋਡੀਅਰ ਲੈਂਡ ਬਣਾ ਕੇ ਉਹਨਾਂ ਨੂੰ ਪੁੱਛ ਲੋ ਸੋਡੀਅਰ ਵਾਲਿਆਂ ਨੂੰ ਵੀ ਤੁਹਾਡਾ ਕਿੰਨਾ ਹਾਲ ਚੰਗਾ ਹੈ ਉਹ ਸਿੱਖ ਬਣ ਨੂੰ ਫਿਰਦੇ ਨੇ ਤੁਸੀਂ ਸਾਈ ਵੱਲ ਨੂੰ ਫਿਰਦੇ ਹੋ ਉਹਨਾਂ ਨੂੰ ਸਿੱਖੀ ਦੀ ਲੋੜ ਕਿਉਂ ਪਈ ਹੈ ਉਹਨਾਂ ਨੂੰ ਪੁੱਛ ਲੋ ਕੀ ਹਾਲ ਹੈ ਤੁਹਾਨੂੰ ਕਾੜਿਆ ਨੂੰ ਪੁੱਛ ਲੋ ਕੀ ਹਾਲ ਹੈ ਤੁਹਾਡਾ ਸਾਰੇ ਬੂਰਖ ਇਕੱਠੇ ਹੋਏ ਨੇ ਉਹ ਰਹੀ ਸ਼ੈਤਾਨ ਦੇ ਲੋਗ ਲੋਭੀ ਨੇ ਲੋਭ ਦਿਖਾ ਕੇ ਤੋੜਦਾ ਲੱਡੂ ਦਿਖਾਉਂਦੇ ਨੇ ਖਾਣ ਉਹਨਾਂ ਨੇ ਆਪੇ ਲੱਡੂ ਦਿਖਾਉੜੇ ਦਿਖਾਉੜੇ ਨੇ ਬਬਲ ਖਾਣੇ ਆਪ ਨੇ ਫੇਰ ਤਦ ਆਨੇ ਦੀ ਸੀਰ ਨਹੀਂ ਆਪਣੇ ਨੂੰ ਦੇਣੀ ਹੈ। ਦਿਖਾਈ ਰ ਲੱਡੂ ਦਿਖਾਈ ਦਰ। ਕਿਉਂਕਿ ਬਸ ਇਹਨੇ ਦਿਖਾਈ ਨੇ ਪਹਿਲੇ ਇਲੈਕਸ਼ਨ ਸਾਰੇ ਸਾਰੇ ਇੱਕੋ ਜਿਹੇ ਥੋੜਾ-ਮੋਟਾ ਫਰਕ ਹੁੰਦਾ ਚਲੋ। ਇਹ ਹੁੰਦਾ ਹੀ ਆ। ਜੀ ਜੰਤ ਸਭ ਸਾਰੀ ਕੀਤੇ ਪਾਸਾ ਢਾਲਣ ਆਪ ਲਗਾ ਸਾਬ ਉਹਦੇ ਚਲਾਏ ਤੇ ਚੱਲਦਾ ਹੈ ਜੇ ਅੱਜ ਦਾ ਹਾਲਤ ਹੈ ਸੰਸਾਰ ਦੀ ਕੀਤੀ ਸਾਰੇ ਲਿਆਉਣੇ ਉਹਨੇ ਸੱਚ ਦੇ ਉੱਤੇ ਨਹੀਂ ਬੋੜ ਕੇ ਜਾਂ ਬਹੁਤ ਦੀਦੀ ਸਾਰਿਆਂ ਨੂੰ ਬਹੁਤ ਤੋਂ ਬਚਾਉਣ ਵਾਲਾ ਹੁਣ ਕੀ ਹੈ ਅਬਰ ਕਿਵੇਂ ਹੋਵੇ ਕਦੂ ਇਹਦੇ ਵਿਸ਼ਵਾਸ ਨਹੀਂ ਅਮਨ ਹੋ ਜੂਗਾ ਪਰ ਉਸਾਇ ਕਦੂ ਇਹ ਤਾਂ ਹੈ ਜੀ ਅਮਨ ਕਬ ਹੋ ਜੂਗਾ ਅਮਨ ਹੋ ਜੂਗਾ ਈਮਾਨ ਨਾਲ ਜੇ ਈਮਾਨ ਹੈ ਤਾਂ ਅਮਨ ਹੈ ਜੇ ਈਮਾਨ ਨਹੀਂ ਹੈ ਅਮਨ ਨਹੀਂ ਹੋਗਾ ਬਸ ਸੰਸਾਰ ਈਮਾਨ ਤੇ ਆਜਵੇ ਅਮਨ ਹੋ ਜੇ ਸੰਸਾਰ ਨੇ ਬਚਣਾ ਹੈ ਈਮਾਨ ਤੇ ਆਜਵੇ ਇਸ ਕੈਦਾ ਦੋ ਪਹਿਲੂ ਨੇ ਇਮਾਨ ਉਤੇ ਆ ਜੂਗਾ ਬਨਾਪੇ ਹੋ ਜੂ ਜੇ ਇਮਾਨ ਤੋਂ ਦੁਆ ਪਾਸਾ ਆ ਗਿਆ ਬੇਇਮਾਨ ਵਾਲਾ ਆ ਗਿਆ ਤਾਂ ਇਹੋ ਸ਼ੋਕ ਤਾਂ ਬਦਲ ਨਹੀਂ ਹੋ ਉਹੀ ਹੈ ਇਮਾਨ ਨਹੀਂ ਹੈ ਇਵਾਦ ਦੀ ਕਬੀ ਹੈ इवार गिदे ते लेवणे सवाल है इवार लेवणे ठोकमते पाणे ते इने शिस्ती सजी होदे ते जो ओ करदा ठीक है सारे हुकम बुड़ गए पाणे च रहड़ गए साते देर रात ते गए दुए राख कोई खानदी छाडी हो जदो सारे हो दे ਚਲੋ ਜੇ ਰਹੁ ਵੀ ਸਾਰਿਆਂ ਦੇ ਕਮਸ ਕਮ ਉਤਲੇ ਜਿਹੜੇ ਸਰਕਾਰਾਂ ਦੇ ਉਹ ਠੀਕ ਹੋ ਜਾਣ ਜਿਦਾ ਰਾਜਾ ਤਸਾ ਪਰ ਜਾ ਜੇ ਉਤਲੇ ਵੀ ਠੀਕ ਹੋ ਜਾਣ ਥੱਲੇ ਵਾਲਿਆਂ ਨੂੰ ਡਾਂਗਣਾ ਕਰ ਲੈ ਦੇ ਆਪੇ ਹੋ ਜਾਂਦੇ ਪਰ ਉਸਲੇ ਵੀ ਇਮਾਨ ਨੇ ਉਹ ਵੀ ਕਾਹਦਾ ਚੱਲੇ ਹੁਕਮ ਇਹ ਤਾਂ ਪਰਮੇਸ਼ਰ ਨਹੀਂ ਕੋ ਹੈ ਤਾਂ ਗੁਰਬਾਨੀ ਦਾ ਇਹ ਕਹੂਗੀ ਕਿਸੇ ਦੇ ਹੁਕਮ ਨਹੀਂ ਚਲੋਣਾ ਸਾਰਿਆਂ ਨੂੰ ਹੁਕਮ ਤੇ ਰਹਿਣ ਦੀ ਹਦਾਇਤ ਕਰਦੀ ਹੈ ਪਹਿਲਾਂ ਆਪ ਹੁਕਮ ਚ ਰਹੇ ਰਾਜਾ ਪ੍ਰਜਾ ਨੂੰ ਤਾਂ ਕਹੇ ਜਿਹੜਾ ਬੋਲਣ ਵਾਲਾ ਪਹਿਲਾਂ ਆਪ ਪੜ੍ਹਨੇ ਚਾਵੇ ਬਾਅਦ ਚ ਕਹੇ ਉਹਦਾ ਅਸਰੇ ਤਾਹੂਦ ਹੈ ਉਹਦਾ ਅਸਰੇ ਨਹੀਂ ਹੋਣਾ ਕਦਾਂ ਦਾ ਅਸਰ ਹੋ ਰਿਹਾ ਹੈ ਨਾਲ ਕਦਾਂ ਅਸਰ ਹੋ ਰਿਹਾ ਹੈ ਸਾਡਾ ਕਿ ਵੀ ਹੋ ਰਿਹਾ ਅਸੀਂ ਜੋ ਕਹਨੇ ਆ ਉਹ ਆਪ ਅਖਰ ਰੋਲ ਮਾਡਲ ਨਹੀਂ ਹੈ ਕੋਈ ਇਹਨਾਂ ਹੋਰਾਂ ਦੀ ਭਾਸ਼ਾ 'ਚ ਰੋਲ ਮਾਡਲ ਕਹਿੰਦੇ ਕੋਈ ਸਾਡੇ ਕੋਲ ਰੋਲ ਮਾਡਲ ਚਾਹੀਦਾ ਸੀ ਰੋਲ ਮਾਡਲ ਕੋਈ ਗੁਰੂ ਘਰ ਢੂਡਦੇ ਹੈ ਜੇ ਕੋਈ ਉਹ ਦੱਸਦਾ ਦੋ ਕੀ ਹੈ ਇਹ ਜਿਹੜੀਆਂ ਬਿਵਾਰੀਆਂ ਪੈ ਜਾਓਗੇ ਤਾਂ ਸੰਸਾਰ ਚ ਜਿਹਨੂੰ ਸਾਰੇ ਸੰਸਾਰ ਨੂੰ ਆਪਣੇ ਗ੍ਰਿਫਤ ਚ ਲੈ ਲਿਆ ਉਹਨਾਂ ਦੀ ਦਵਾਈ ਕੋਈ ਐਸਾ دارو ਲੋੜ ਲੋ ਜੋ ਰੋਗਾ ਬੱਜੇ ਰੋਗਾ ਕਾ ਕਾ ਸਚਾਰ ਰੋਗੀ ਨਾਮਦਾਰੂ ਨਾਮ ਲਬ ਲੋਕੀ ਹੈ ਨਾਮ ਕੁਰਬਾਨੀ ਕਿਸਮਾਇਆ ਹੈ ਇਹਨੂੰ ੜਕੜੋ ਵਧਨ ਕਰ ਲੋ ਇਹ ਸਮੁੰਦਰ ੜਕਣਾ ਹੋ ਸਮੁੰਦਰ ਕੁਛ ਨਹੀਂ ਸੀ ਐ ੜਕੜੋ ਸਮੁੰਦਰ ੜਕ ਹੈਦਾ ਸਮੁੰਦਰ ਹੈ इस मठकी में शब्द सुजोई हरका बलोबणा बलो मेरे भाई सहजे बलो जैसे तातनो जाई सबको तो सै बड़ी पर अठे काली बड़ी कर दे बलोड़ लगे आ बड़ी छेती देख मेरा खला सारी बेचारी नी बाड़ी बस ਗੁਰਵਾਣੀ ਤੋਂ ਪੁੱਛਿਆ ਨਹੀਂ ਵੀ ਅਰਥ ਠੀਕ ਕਰ ਲੈ ਅਸੀਂ ਅਰਥ ਗਲਤ ਕਰ ਲੈ ਅਸੀਂ ਇੱਕ ਰਸਤਾ ਕੱਢ ਲਿਆ ਆਪਣੇ ਹਿਸਾਬ ਨਾਲ ਆਪਣੀ ਬਤ ਰੋਲ ਆਪਣੀ ਹੁੱਦੀ ਰੋਲ ਗੁਰਬਤਨਾ ਰਹਿ ਕੇ ਮਨਵਤ ਬਣ ਗਈ ਜੀ ਜੀ ਸਭ ਸਾਰੀ ਕੀਤੇ ਪਾਸਾ ਢਾਲਣ ਆਪ ਲੱਗਾ ਪਾਸਾ ਤਾਂ ਆਪ ਢਾਲਦਾ ਜੇ ਕੋਈ ਮਾਰਨ ਵਾਲਾ ਉਹ ਮਾਰਦਾ ਨਹੀਂ ਹੈ ਵਾਰਦਾ ਵੀ ਆਪੇ ਪਰ ਉਹ ਦੀਦਾ ਉਹ ਮਾਰਦਾ ਵਾਰਦਾ ਨਹੀਂ ਅੱਗੇ ਪਿੱਛੇ ਕਰਦਾ ਪਿਆਦੇ ਨੇ ਵਜ਼ੀਰ ਵਾਰਤਾ ਜੇ ਚੱਕੇ ਤਾਂ ਉਹ ਸਿਰ ਤੇ ਵਾਰਿਆ ਤਾਂ ਹੀ ਵਾਰਿਆ ਚੱਕਿਆ ਕੀ ਨੇ ਹਲਾਇਆ ਕੀ ਨੇ ਡਾਲਿਆ ਕਈ ਵਾਰ ਉਹ ਲੇਗਾਈ ਲੀਉਂਦੀ ਉਹਦੀ ਉਹ ਕਹਾਂ ਲੈ ਬਚ ਗਿਆ ਵਜ਼ੀਰ ਮੇਰਾ ਦਾ ਵਜ਼ੀਰ ਵਰਦਾ ਸੀ ਉਦੀ ਸਮਝ ਨਹੀਂ ਆਇਆ ਸਮਝਣ ਵਾਲਾ ਹੋਰ ਹੈ ਹੱਥ ਉਹਦੇ ਚਲਾਏ ਤੇ ਚੱਲਦਾ ਹੱਥ ਨਾਲ ਉਹਨੂੰ ਪਤਾ ਲੱਗਦਾ ਚਲਾਏ ਤੇ ਚੱਲਦਾ ਉਹਨੇ ਵਜਣਾ ਸੀ ਉਹਨੇ ਉਹਨੂੰ ਸਮਝਣੇ ਨਹੀਂ ਦਿੱਤਾ ਇਹ ਖੇਡ ਹੈ ਇਹ ਰਾਜाराम ਦੀ ਕਹਾਣੀ ਹੈ ਇਹ ਰਾਜाराम ਦੀ ਕਹਾਣੀ uh <clears throat>